ਜਿਹੜੀ ਤਾਂਤੀ ਹੁੰਦੀ ਹੈ ਉਹਦੇ ਪੇੜ-ਪੌਦੇ ਹੁੰਦੇ ਨੇ ਉਹ ਜੇ ਜਾਨਵਰ ਕੁਝ ਪੰਛੀ ਹੁੰਦੇ ਨੇ ਜਦੋਂ ਪਰਮੇਸ਼ਰ ਨੇ ਇੱਥੇ ਪੈਦਾ ਕੀਤਾ ਹੋਵੇ ਜੋ ਕਰਨਾ ਸਿਰਹਾ ਆਦਮੀ ਦੀ ਗੱਲ ਨਹੀਂ ਹੈ ਕੀ ਤੁਸੀਂ ਆਦਮੀ ਦੀ ਪਲਾਨ ਸਮਝਦੇ ਹੋ ਸਾਪਾ ਜਾ ਪ੍ਰਗਟਿਓ ਖਾਲਸਾ ਪਰਮਾਤਮਾ ਜੇ ਤੁਸੀਂ ਇਹ ਗੱਲ ਨਹੀਂ ਸਮਝਦੇ ਤਾਂ ਇਹ ਪੰਕਤੀ ਦਾ ਅਰਥ ਨਹੀਂ ਹੋਵੇ। ਛਿੱਟਾ ਦਉਣਾ ਦਿੱਤਾ। ਬਹੁੜਾ ਛਿੱਟਾ ਦਉ। ਛਿੱਟਾ ਦਉਦੇ ਪਹਿਲਾਂ ਦਿੱਤਾ ਫਿਰ ਹਲ ਫੇਰਿਆ। ਤਾਂ ਉਹ ਵੇਖੇ ਬਾਕੀ ਤਾਂ ਸਾਰਾ ਜੰਗਲ ਹੈ। ਅੱਗੇ ਜੰਗਲ ਹੁੰਦੇ ਸੀ। ਜੰਗਲ ਦੇ ਵਿੱਚ ਕਿਸੇ ਨੂੰ ਥੋੜੀ ਜਗ੍ਹਾ ਤੋੜ ਲੈਣੀ। ਜਿੱਦ ਤਰ੍ਹਾਂ ਘਟ ਹੋਲੇ। ਸਿੱਧਾ ਜਾਂ ਹੌਲੇ ਨਾ ਬਹੁਤ ਵੱਡੇ ਰੋ ਹੋਲੇ। ਹਲਕੇ ਅੱਕ ਵਗੈਰਾ ਹੋਲੇ ਪਧਰੀ ਚ ਜੀ ਵੀਰ ਹੋਣੀ ਉਹ ਜੰਗਲ ਤੋੜ ਕੇ ਉਹਦੇ ਆਲੇ-ਦਾਲੇ ਕੱਡੇ-ਕੁੰਡੇ ਰੱਖ ਕੇ ਆ ਜਿਹੜੇ ਦਰਖਤਾਂ ਦੀ ਬੋੜੀ ਬੋੜੀ ਆਂਗਾਰੇ ਰੱਖ ਕੇ ਉਹ ਵਿਚਾਲੇ ਵਿਚਾਲੇ ਬਾਹ ਕੀ ਗੀਦੜ ਉਹਨਾਂ ਛਿੱਟਾ ਕੀ ਦਿੱਤਾ ਸੀ ਐਵੇਂ ਥੋੜੀ ਫਤਲੋਂ ਕਿਸੇ ਨੇ ਛਿੱਟਾ ਦਿੱਤਾ ਵਾਹ ਆ ਵੀ ਜਾਲ ਬਾੜ ਕੀਤੀ ਉਹ ਰੱਬ ਪਹਿਲਾਂ ਭਾਈ ਲਗਾ ਵਰਗੇ ਬਾਬੇ ਵਰਗੇ ਐਵੇਂ ਜਿਵੇਂ ਨਾਲ ਉਹ ਸੀ ਉਹਨੇ ਗੇ ਫਸਲ ਹੈ ਬਾਕੀ ਅੜੜਾਲੇ ਹੈ ਅੜੜਾਲੇ ਜੰੜਾਲੇ ਫਿਰ ਅਗਰ ਬਾੜ ਵੀ ਕੀਤੀ ਹੈ ਬਾੜ ਕਾਦੀ ਕੀਤੀ ਹੈ ਜਿਹੇ ਇਸਲਾਮ ਧਰਮ ਦੀ ਬਾੜ ਲਾਉਂਦੀ ਉਹਨੂੰ ਜੰਮਲ ਡੀਸ ਹੁੰਦੇ ਇਹ ਤਾਂ ਹਮੇਸ਼ਾ ਵਿਰੋਧੀ ਰਹੇ ਤੇ ਅੱਛਾ ਇਸਲਾਮ ਬਾੜ ਹੈ ਈ ਗੁਰਮਤਿ ਹੈ ਹੋਰ ਕੀ ਹੈ ਇਸਲਾਮ ਬਾੜ ਹੈ ਹੁੰਦਾ ਪੈਸਾ ਨਹੀਂ ਸੀ ਹੁੰਦਾ ਉਹ ਵੀ ਪਰਮੇਸ਼ਰ ਨੇ ਸਾਰਾ ਕਿੰਨਾ ਕਿਰੇ ਇਸਲਾਮ ਧਰਮ ਹੈ ਹਿੰਦੂਸਤਾਨ ਦੇ ਵਿੱਚ ਇਕੱਠਾ ਧਾਰਕ ਸਿੱਕੀ ਤੇ ਅਮਲਾ ਇਹੋ ਜਿਹਾ ਕੀਤਾ 47 ਤੇ ਬੋਲ ਕਰ ਲਿਆ ਧਾਰਕ ਉਹਨਾਂ ਨੇ ਤਾਂ ਹਮਲਾ ਹੀ ਨਾ ਤੱਕ ਜਿੱਤੂ ਅਰ ਸਿੱਖ ਇੱਕ ਅਜੇ ਦੁਹਾਈ ਦਿੰਦੇ ਸੀ ਆ ਤੋਂ ਪਹਿਲਾਂ 47 ਤੋਂ ਪਹਿਲਾਂ ਕੋਈ ਨੂੰ ਪਤਾ ਵੀ ਇਹ ਮੁਸਲਮਾਨ ਹੋ ਗਏ ਬੈਲੈਂਸ ਸਾਡੇ ਹੱਥ ਸੀ ਬੈਲੈਂਸ ਤਾਂ ਥੋੜਾ ਹੀ ਹੁੰਦਾ ਬਰਾਬਰ ਦੇ ਤਰ੍ਹਾਂ ਬੈਲੈਂਸ ਕਿਹਨਾ ਹੁੰਦਾ ਅੰਗਰੇਜ਼ਾਂ ਨੂੰ ਸਿਰਫ ਵਾਰਸ਼ਲ ਕੋਮ ਦੀ ਜਰੂਰਤ ਸੀ ਜਿਹੜੇ ਬੰਦੇ ਨੇ ਰਾਜ ਕਰਨਾ ਹੁੰਦਾ ਉਹਨੂੰ ਮਰਨ ਵਾਲਣ ਵਾਲੇ ਬੰਦੇ ਚਾਹੀਦੇ ਰਾਜ ਕਰਨੇ ਦੂਜੀ ਗੱਲ ਭਰੋਸੇ ਹੋਵੇ ਤੇ ਤੋਏ ਕਾਤੀ ਅਸੀਂ ਖਾਂਸੀ ਬੜੇ ਗਹਿਰੇ ਹਿਸਟੋਰੀਕਲ ਲੀਡਰਸ ਉਹ ਕਹਿੰਦੇ ਜਿਹੜਾ ਆਪਣੇ ਇਸ਼ਟ ਤੋਂ ਦਿੱਕਾ ਸੁਗਾ ਕੇ ਬੁੱਕਰ ਸਕਦਾ ਉਹ ਆਦਮੀ ਦਾ ਵਿਸ਼ਵਾਸ ਨਹੀਂ ਕਰਦੇ ਸੀ ਤਾਂ ਕਸੁੱਦ ਦੇ ਸੀ ਸਿੱਖ ਨੂੰ ਕਹਿੰਦੇ ਸੀ ਅਮਰਤ ਸਾਹਿਬ ਜਿਉਂ ਕਰਤ ਨਹੀਂ ਸਕਦਾ ਸਿੱਖੀ ਨਹੀਂ ਕਰ ਸਕਦਾ ਤੇ ਤੁਸੀਂ ਫੌਜ ਚ ਨਹੀਂ ਰਹੇ ਤੇਰਾ ਗੀ ਪ੍ਰੋਸੈਸ ਸਾਡਾ ਹਾਰੇ ਕਰਨਾ ਰਾਜਨੀਤੀ ਹੈ ਯੁੱਧ ਕਰਨਾ ਯੁੱਧ ਦੀਤੀ ਹੈ ਧਰਮ ਨੂੰ ਕਰ ਬਿਗਾਉਣਾ ਧਰਮ ਦੀਤੀ ਹੈ ਤੁਹਾਨੂੰ ਉਹਦੇ ਤਰੀਕੇ ਨਾਲੇ ਬਾਲੇ ਹਾਂਜੀ ਹਾਂ ਉਹਦੇ ਤਰੀਕੇ ਨਾਲ ਧਰਮ ਦੀਤੀ ਲੱਗਦਾ ਹੈ ਰਾਜਨੀਤੀ ਲੱਗਦਾ ਹੈ ਯੁੱਧ ਦੀਤੀ ਲੱਗਦਾ ਤੇ ਨੇਤੀਆਂ ਜੀ ਆਉਂਦੀਆਂ ਨਹੀਂ ਹੂੰ ਤਕਾਲੀਅਰ ਮੁਦੱਤ ਤੇ ਦੇਰੀਆਂ ਉਹਦੀਆਂ ਹਾਂ ਇੰਨਾ ਖਾਲਸਾ ਨੂੰ ਤੱਲੇ ਆਉਂਦੀਆਂ ਸੀਆਂ ਸਖਾਈਆਂ ਦਸ ਪਾਸ਼ਾ ਨਹੀਂ ਸੀ ਗੁਰੂ ਘਰ ਦੇ ਸਕੇ ਦੰਨਾ ਦਾ ਹੀ ਮਲ ਕੇ ਸੁਮੇਲ ਹੈ ਹਾਂ ਤੇਨਾ ਸੁਏ ਨਾ ਯੁੱਧ ਨੀਤੀ ਰਾਜਨੀਤੀ ਰਾਜਨੀਤੀ ਯੁੱਧ ਨੀਤੀ ਧਰਮ ਨੀਤੀ ਜਿੰਨੇ ਨਹੀਂ ਆਉਂਦੀਓ ਤੁਸੀਂ ਕਹੋਗੇ ਇੱਕ ਵੱਖ ਵੀ ਕਮਜ਼ੋਰ ਨਹੀਂ ਚਾਹੀਦਾ ਯੁੱਧ ਨੀਤੀ ਦੇ ਵਿੱਚ ਹਮ ਤਦ ਕੋ ਤੁਸੀਂ ਅਕਾਲੀ ਫੂਲਾ ਸਰ ਹਮ ਧਰਮ ਨੀਤੀ ਤੇ ਰਾਜਨੀਤੀ ਚ ਕਮਜ਼ੋਰ ਸੀ ਮੈਂ ਤੁਹਾਨੂੰ ਅਰਦਾ। ਅੱਜ ਇਹ ਦੇਖਦਾ। ਦੋ ਨੀਤੀਆਂ ਹਨ ਜੀ। ਦੋ ਨੀਤੀਆਂ ਨੇ। ਦਾ ਰਾਜਨੀਤੀ ਸੀ। ਰਾਜ ਵੀ ਉਲਟਾ ਲੈ ਗਏ। ਇਸ ਗੱਲ ਦਾ ਅਰਥ ਉਲਟ ਲੈ ਗਏ ਕਿ ਰਾਜ ਨਹੀਂ ਕਰਨਾ। ਰਾਜ ਨਹੀਂ ਕਰਨਾ ਹੋਰ ਗੱਲ ਹੈ। ਰਾਜਨੀਤੀ ਚ ਨੁਲ ਹੋਣਾ ਹੋ ਕੇ ਰਹਿਣਾ ਹੋਰ ਗੱਲ ਹੈ। ਰਾਜਨੀਤੀ ਦੀ ਸਮਝ ਪੂਰੀ ਚਾਹੀਦੀ ਹੈ ਪਰ ਰਾਜ ਨਹੀਂ ਕਰਦਾ। ਆਪ ਨਹੀਂ ਕਰਨਾ ਕਿਸੇ ਤੇ ਕਰਾਉਣਾ ਕਰਨਾ ਨਹੀਂ ਕਰਾਉਣਾ ਪਰ ਮੇਰਾ ਰਾਏ ਕਿਸੇ ਤੇ ਕਰਾਉਂਦਾ ਆਪ ਨਹੀਂ ਕਰਦਾ ਆਪੇ ਕਰਦਾ ਹਾਂ ਰੱਬੇ ਜਿਹੜਾ ਦੂਏ ਦੇ ਰਾਜ ਕਰਾਉਂਦਾ ਉਹ ਆਪ ਕਰਦਾ ਹੈ ਉਹ ਜਿਵੇਂ ਲਾਲੂ ਕੋ ਜਿਆਦਾ ਠੀਕ ਹੈ ਜਿਹੜਾ ਕਰਾਉਣਾ ਉਹ ਆਪੇ ਕਰਦਾ ਸੀ ਲਾਲੂ ਜਿਆਦਾ ਠੀਕ ਹੈ ਦੀ ਗੱਲ ਠੀਕ ਹੈ ਕਹਿੰਦਾ ਪ੍ਰਧਾਨ ਬਣਾਉਂਦੇ ਪ੍ਰਧਾਨ ਮੰਤਰੀ ਰਾਜਨੀਤੀ ਹੈ ਕਦੇ ਰਾਜ ਆਪ ਨਹੀਂ ਕਰਦਾ ਤੋਡੇ ਗੂਠੇ ਤਾਰੇ ਚੈਦੇ ਜਿਹਨੂੰ ਤਿਲਕ ਦੇ ਤਰ੍ਹਾਂ ਆਇਓ ਕਰੂ ਹਾਂ ਗੂਠੇ ਦਾ ਗੱਲ ਤਾਰੇ ਗੂਠੇ ਜਪੜੇ ਜਿ ਰੱਖਣਗੇ ਰੋੜਾ ਦੇ ਸੀ ਇਹ ਰਾਜਨੀਤੀ ਕਿ ਸਮਾਂ ਦੇਖਣ ਬਖਤ ਜੇ ਵਿਚਾਰ ਨਹੀਂ ਤਾਂ ਬੱਦਾਂ ਦੀ ਯਾਰ ਬੰਦਾ ਕਹੇ ਇਹ ਸੋਈ ਹੈ ਨਾ ਬਖਤ ਨਹੀਂ ਵਿਚਾਰਦਾ ਇਹ ਰਾਜਨੀਤੀ किस ਟਾਈਮ ਤੁਸੀਂ हमला ਕਰਨਾ ਹੈ करना, ਕਿਵੇਂ ਕਰਨਾ ਕਿਹੋ ਜਿਹਾ ਕਰਦੇ ਹਮ ਸ਼ਬਦ ਕਰਨਾ ਹੈ ਸਰੀਰ ਕਰਨਾ ਹੈ ਸਰੀਰ ਨਹੀਂ ਕਰਦੇ ਹਮ ਚੁੱਪ ਵੀ ਕਰਨਾ ਹੈ ਰਾਜਨੀਤੀ ਕਈ ਵਾਰ ਅਗਲਾ ਬੋਲੀ ਜਾਂਦੇ ਚੁੱਪੇ ਕਰਦੇ ਕਈ ਵਾਰ ਹੁਬਲਾਵਰੇ ਰਹਿੰਦੇ ਨੇ ਹੁਬਲਾਵਰੇ ਬੰਦੀ ਗਈ ਚਲਦੀ ਬੈਠੇ ਨੇ ਕਿ ਦਰਦੇ ਨੇ ਨੀਤੀਏ ਨੀਤੀ ਜੇ ਨੀਤੀਏ ਜੇ ਨੀਤੀ ਜਿ ਵੀ ਪੂਰੇ ਨੇ ਰਾਜਨੀਤੀ ਜਿ ਵੀ ਪੂਰੇ ਨੇ ਇਹ ਖੋਲ ਦੇ ਵੀ ਅੱਜ ਤੁਣੀ ਤਰਮੀ ਕੋਈ ਦਰ ਉਹ ਰੇ ਚੱਲਦਾ ਹੀ ਹੈ ਇਹਦੇ ਵਿੱਚ ਤਰੋਂ ਦਿੱਤੀ ਤਰਮੀ ਵੀ ਪੂਰੇ ਨੇ ਇਹੋ ਤੇ ਦੇ ਪ੍ਰੈਸ਼ਰ ਚ ਕਿਸੇ ਦੇ ਪ੍ਰੈਸ਼ਰ ਤੇ ਤਰਮ ਨਹੀਂ ਛੱਡਦਾ ਤਰਮ ਦਿੱਤੀ ਹੈ ਕੀ ਪ੍ਰੈਸ਼ਰ ਕੇ ਆ ਕੇ ਤਰਮ ਛੜਾਵੇ ਜੋ ਕੋਈ ਨਹੀਂ ਛੱਡਦਾ ਇਹ ਨੂੰ ਕਿਵੇਂ ਫੇਰੋਲੇ ਇਹ ਤਰਮ ਦਿੱਤੀ ਕਿਸ ਤਰ੍ਹਾਂ ਅਸੀਂ ਗੱਲ ਕਰਨੀ ਹੈ ਬਜ਼ਾਰ ਚ ਆਉਣਾ ਹੈ ਕਿਸ ਟਾਈਮ 6500 ਪੂਰੇ ਨੇ ਅਸੀਂ ਪਰ ਜੰਮੇ ਚਲੀ ਜਾਣਾ ਜਾਣਾ ਦਾ ਹਮਲਾ ਕਰ ਮੈਂ ਸਾਡੇ ਛਾੜ ਚ ਗਦਲ ਸਾਡੀ ਉੱਥੇ ਸੀ ਦਲਦਲ ਹਮ ਛਾੜ ਗੁਰਦੁਆਰਾ ਲੋਟ ਸਾਡੇ ਪਹਿਲੀ ਵਾਰ ਜਿਹੜੇ ਗੁਰਦੁਆਰੇ ਦਾ ਲੋੜਾ ਸੀ ਹੂੰ ਲੋਟ ਸਾਹੀ ਸੀ ਪੈਪਸੂ ਦਾ ਗੁਰਦੁਆਰੇ ਸਾਡੇ ਕੋਲ ਰਹੇ ਸੀ ਨਾ ਗੁਰਦੁਆਰਾ ਪੰਜਾਬ ਸੀ ਪੈਪਸੂ ਨਹੀਂ ਸੀ ਪੈਪਸੂ ਦਾ ਗੁਰਦੁਆਰਾ ਸਾਡੇ ਜਿਆਦਾ ਸਾਡੇ ਕੋਲ ਸੀ ਪੈਪਸੂ ਟੁੱਟ ਗਿਆ ਪੰਜਾ ਵਿੱਚ ਇਨਾ ਨੇ ਕਿ ਉਹਦੇ ਕੋਲ ਕੋਸ਼ਤ ਅਲਵਾਜ਼ ਚ ਆਇਆ ਸਾਡਾ ਉਹ ਚ 64 ਚ ਸੈ ਦੂਰ ਹਾਈ ਕੋਰਟ ਇਹ ਗੁਰਦੁਆਰੇ ਬਾਰੇ ਵੀ ਸਾਡਾ ਪੰਤ ਰੂ ਗੁਰਦੁਆਰੇ ਮਿਲ ਲੈ ਕੇ ਗੁਰਦਾਰਿਆ ਜੀ ਆਪਰੇ ਇਹ ਕਹਿੰਦੇ ਸੀ ਵੀ ਅਸੀਂ ਲੋਟਸ ਦਾ ਜਵਾਬ ਨਹੀਂ ਦੇਣਾ ਸੰਤਾ ਸੁਗਨ ਤਾਂ ਹੂੰ ਉਹ ਉਹ ਮੇਰਾ ਖਿਆਲ ਹੈ 63 ਦੀ ਗੱਲ ਹੈ ਸਿਸ ਪ੍ਰਤਾਪ ਸਿੰਘ ਕਰ ਉਹ ਸੀ ਹੂੰ ਚੌੜਚ ਬਰੇ ਤੋ 63 ਦੀ ਗੱਲ ਤਾਂ ਰੋਲਾ ਪਾਤਾ ਨੇ ਸਾਰਿਆਂ ਨੂੰ ਆਪਾਂ ਜਵਾਬ ਨਹੀਂ ਦੇਣਾ ਇਹ ਗੱਲ ਕਲੂਟੀ ਗੱਲ ਸੀ ਫਿਰ ਉੱਥੇ ਮੈਂ ਕਹ ਵੀ ਇਹ ਗੱਲ ਗਲਤ ਹੈ ਸਾਡੇ ਉਹ ਕਾਨਫਰੰਸ ਜੀ ਹੋਈ ਮਤਲਬ ਆਪਸੀ ਮੀਟਿੰਗ ਹੋਈ ਦਬਦਬੇ ਮੀਟਿੰਗ ਦੇ ਵਿੱਚ ਮੈਂ ਹਰ ਵਾਰ ਪੜਿਆ ਪੜ ਕੇ ਦੇਖੇ ਮੇਰੇ ਤੇ ਸਾਰੇ ਕਹਿੰਦੇ ਵੀ ਤੂੰ ਇਹਦਾ ਕੋਹ ਹੱਲ ਕੱਢੇ ਤੇ ਜਾਣ ਕੇ ਲੜਾਈ ਕਰਾਉਣਾ ਚਾਹਦੇ ਸੱਤ ਲੜਾਈ ਕਰਕੇ ਮਤਲਬ ਸ਼ੁਰੂ ਤੇ ਵੀ ਨਹੀਂ ਸੀ ਇਹ ਸਰਕਾਰ ਨੂੰ ਪ੍ਰੈਸ ਫੋਰਟ ਖਾਰੋਸੀ ਫੈਸਲਾ ਹੋਇਆ ਬਈ ਸਾਡੀ ਲੜਾਈ ਫਿਰ ਕੱਲ੍ਹ ਦੱਸ ਸਰਕਾਰ ਨਾਲ ਹੋਣੀ ਹਮ ਡੋਲਟ ਹਾਈ ਕੋਰਟ ਦੇ ਸਰਕਾਰ ਸਾਡੀ ਹੈ ਹਮ ਸਰਕਾਰ ਜੇ ਅਸੀਂ ਲੋਟ ਦਾ ਜਵਾਬ ਦੇ ਦਿੰਦੇ ਤਾਂ ਬਦਲੇ ਇੱਕ ਤਰਫਾ ਕਰ ਰਹੀ ਸਾਡੇ ਨਾਲ ਕਬਜ਼ਾ ਕਰ ਲਊ ਡੋਲੋਗੇ ਪਰਸ ਹਾਈ ਕੋਰਟ ਦਾ ਹੋਊਗਾ ਹੁਕਮ ਲੜਾਈ ਦਾ ਸਰਕਾਰ ਨਾਲ ਹੋਣੀ ਸਾਡੀ ਸਰਕਾਰ ਸਾਡੀ ਹੈ ਤਾਂ ਉਹ ਇਹ ਨੀਤੀ ਕਿੱਥੇ ਨਹੀਂ ਹੈ ਜਿਹੜੀ ਕਹਿੰਦੀ ਆ ਅਸੀਂ ਦੁਸ਼ਮਣ ਉਹ ਆਪਣੀ ਉਹ ਬਿੱਤਰ ਦੋ ਛੋੜ ਹੋ ਜੀ ਉਹ ਤੇ ਇਹੋ ਤੇ ਵੀ ਕੀ ਕਹਿਦੇ ਹੋ ਨੀ ਗੱਲ ਇਹ ਉਹ ਤੇ ਨਹੀਂ ਨੀ ਗੱਲ ਸਰ ਨਾ ਰਾਜਨੀਤੀ ਦੀ ਗੱਲ ਕਹਿੰਦੀ ਉਹਨਾਂ ਦੀ ਯੁੱਧ ਨੀਤੀਆਂ ਤੇ ਰਾਜਨੀਤੀ ਦੋਵੇਂ ਕੰਮ ਇਹ ਬੂ ਕਰ ਲਿਆ ਨਹੀਂ ਇਹ ਨਹੀਂ ਆਪਾਂ ਜਵਾਬ ਦੇਣਾ 20 ਸਾਲ ਨਹੀਂ ਕਹਿ ਸਕਦਾ ਸਟੇਜਾਂ ਤੇ ਤੁਸੀਂ ਕਹਿੰਦੇ ਨਾ ਵੀ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਫਿਰ ਸਾਡਾ ਤਲਵਾਰਾਂ ਦੇ ਮੁੱਠਿਆਂ ਦਾ ਤਾਕ ਆ ਜਾਊਗਾ ਤਖਤ ਵੀ ਇਕੱਠੇ ਕਰੋ ਤਬਲ ਦੇ ਵਿੱਚ ਵੀ ਜਾਓ ਕਾਗਜ਼ ਸਾਡੇ ਕੋਲ ਕੀ ਹੈ ਕਾਗਜ਼ ਨਾਲ ਲੜੋ ਕੋਈ ਸ਼ਿਕਾਇਤ ਨਾਲ ਲੜੋ ਬਸ ਕਰਤਾ ਕਰ ਗੱਲਾਂ ਕਾਕੇ ਮੈਂ ਭੈਗਿਆ ਇੰਨਾਂ ਤੇ ਸਾਰੀ ਵਸੋ ਵੀ ਪ੍ਰੋਬਲਮ ਯੋਗ ਪ੍ਰਚਾਰ ਕੀਤਾ ਸੀ 2 ਦੋਸਤ ਮਹੀਨੇ ਪਹਿਲਾਂ ਤੇ ਆਇਆ ਸੀ ਤਾਂ ਸਾਰਾ ਕਿੱਥੇ ਹੋ ਗਿਆ 2 ਵਜੇ ਤੁਸੀਂ ਕਰਤਾ ਤਾਂ ਨਾਲ ਰਫੀ ਬਣਾ ਹੈ ਸੰਤਾ ਸਭ ਥੋੜੀ ਲੱਗ ਰਹੀ ਸਾਰਾ ਡੇਸ ਕਰਤਾ 5 ਮਿੰਟਸ ਮੈਂ ਲਾ ਫਰੋਣਾ ਸਾਰੇ ਚੁੱਪ ਕਰਕੇ ਬਾਬਾ ਜੀ ਸਮਝਾ ਦੋ ਬਈ ਜਵਾਹਰ ਇਹਨਾਂ ਪਹਿਲਾਂ ਕੋਈ ਨਾ ਉੱਠਿਆ ਇਹਨਾਂ ਨੇ ਉੱਠ ਕੇ ਕਹਿਤਾ ਜੀ ਅਸੀਂ ਦੇਖੋਗੇ ਜਾਂ ਕੱਲ ਕਿੱਥੇ ਜਾ ਰਹੇ ਰਹਣਗੇ ਸਰਮ ਉਹਨਾਂ ਨੇ ਬੁਗਾਰਿਆ ਇਹ ਕੀਤਾ ਉਹ ਕੀਤਾ ਫਤਾਨ ਕੀਤਾ ਚੁੱਪ ਸਾਰੇ ਚੁੱਪ ਕਰਕੇ ਕੋਈ ਉਹ ਬੋਲੇ ਯਾਰ ਕਰ ਕਹਿੰਦਾ ਗੱਲ ਥੋੜ੍ਹੋ ਥੋੜ੍ਹੋ ਚੁੱਪ ਕਰਕੇ ਬੈਠੇ ਇੱਥੇ ਦੋ ਦੇਖਦੇ ਕੱਲ ਮੋਰਚਾ ਲੱਗ ਜਾਣਾ ਨੇ ਜਿਹੜੇ ਇੱਥੇ ਖੜਨਾ ਭੱਜਣ ਉੱਥੇ ਜਾ ਕੇ ਰੋ ਸਮੂਹ ਜਿੱਥੇ ਕਿਉਂ ਐ ਕਰ ਲਿਆ ਐ ਕਰ ਲਿਆ ਜਿਹਨੇ ਗੱਲ ਕਰਨੀ ਹੋਰ ਕਰ ਲੋ ਅਰਦਾਸ ਤੋਂ ਪਹਿਲਾਂ ਪਹਿਲਾਂ ਟਾਈਮ ਵੈਲ ਉਹ ਸੋਚ ਲੋ ਕੱਲ ਨੂੰ ਅਰਦਾਸ ਕਰ ਲਾਂਗੇ ਡਿਸਕਸ ਕਰ ਲੋ ਕਾੜੀ ਕੋਈ ਪਰ ਫੇ ਖੜਨਾ ਪਊਗਾ ਸਾਰੇ ਜੀ ਤੇ ਮੇਰੇ ਪਿੱਛੇ ਬੈਠੇ ਤੇ ਸਲਤਰ ਲਾਲ ਸਿੰਘ ਵੀ ਹੋਰ ਉੱబె ਨੂੰ ਕਹਿਣ ਲੱਗੇ ਤੂੰ ਪਿੱਛੋਂ ਹੱਥ ਲਾਉਣ ਲੱਗੇ ਹੂੰ ਜਿਹੜੇ ਪਿੱਛੇ ਸਾਡਾ ਕੋਲ ਕੋਈ ਬਾਬਾ ਚੇਸੋ ਵਾਲਾ ਹੂੰ ਮੈਂ ਖੜਿਆ ਖੜਿਆ ਫਿਰ ਬਖਾਜੀ ਜੇ ਮੈਂ ਕੁਝ ਕਹਿਣਾ ਚਾਹੁੰਦਾ ਜੇ ਮੈਨੂੰ ਅੱਗੇ ਹੋਵੇ ਜੈਦਾਰ ਨੇ ਜਦ ਕਹਿੰਦਾ ਕਹਿੰਦਾ ਤੂੰ ਕਿਸੇ ਨੂੰ ਤੇਰੋ ਘੱਟੇ ਲੋਂਦੀ ਲੋ ਹੂੰ ਬਾਬੇ ਨੂੰ ਅੰਦਾ ਘਰ ਸਾਰੇ ਬਰਾਬਰ ਨੇ ਮੈਂ ਕਹਿੰਦਾ ਸੀ ਵੀ ਇਹ ਸਾਰੇ ਸੀਨੀਅਰ ਨੇ ਹਾਂ ਮੈਂ ਜੂਨੀਅਰਾਂ ਬੜੇ ਚਾਰ ਸਾਲ 5 ਸਾਲ ਹੋਏ ਨੇ ਸਾਰੇ ਆਏ ਰੂ ਇਹ ਸਾਰੇ ਪੁਰਾਣੇ ਨੇ ਉਹ ਨੇ ਉਹ ਗੱਲ ਜਿਹੜੀ ਉਹਨਾਂ ਦੇ ਦਿਮਾਗ ਸੀ ਪਹਿਲਾਂ ਹੀ ਬੰਬ ਬਣਾ ਕੇ ਤੂੰ ਇਹ ਹੈ ਇਹ ਬਾਬੇ ਨਾਨਕ ਦਾ ਘਰ ਹੈ ਸਾਰੇ ਕੁਝ ਗੱਲ ਜਿਹੜੀ ਸਹੀ ਹੋ ਗਈ ਬਣੀ ਕਿਉਂ ਨਹੀਂ ਤੂੰ ਕਹਿ ਸਕਦਾ ਕੈ ਪਤਾ ਤਾਂ ਥਾਏ ਉਹਨੂੰ ਵੀ ਭੰਗ ਸੀ ਵਾਗ ਤੇ ਦੱਸਿਆ ਨਹੀਂ ਜੈਸੇ ਨੂੰ ਵੀ ਸਾਡਾ ਕੀ ਪ੍ਰੋਗਰਾਮ ਗੁਰੂ ਜੀ ਦੱਸੇ ਇੰਨਾ ਗੁਰੂ ਪਤਾ ਸੀ ਵੀ ਕੁਛ ਉਹ ਕਰ ਰਿਹਾ ਉਹੀ ਕੁਛ ਕਰੂ ਇਹਦਾ ਜਵਾਬ ਬਾਕੀ ਤਾਂ ਬੜੇ ਸੀਗੇ ਮੈਂ ਗੁਰਦਾਰ ਪੜ ਲਿਆ ਉਹ ਧਾਰਾ ਦੇ ਤਹਿਤ ਰੋਡ ਸੀ ਉਧਰ ਤਾਂ ਪੜ ਲਈ ਉਹਦੇ ਜਿਹੜਾ ਧਾਰਾ 'ਚ ਹੈ 14 ਨੰਬਰ ਉਹ ਜਿਹੜੀ ਹੈ ਧਾਰਾ ਦਾ 3 ਕਲੋਜ਼ ਹੈ ਕਿ ਗੁਰਦਾਰ ਪੰਥ ਲੈ ਸਕਦਾ ਹੈ ਪੁਜਾਰੀ ਮੈਂ ਕਿ ਪੰਥ ਸੀ ਇਹ ਸਾਬਤ ਕਰਨਾ ਸੀ ਪੰਥ 1920 ਚ ਰਜਿਸਟਰ ਹੋਇਆ ਅੱਛਾ ਗੁਰਦੁਆਰਾ ਨੂੰ ਮੈਂ ਸਾਫ ਤੇ ਨਹੀਂ ਹੁਣਦਾ ਵੀ ਗੁਰਦੁਆਰਾ ਪਰਵਰਤਨ ਕਮੇਟੀ ਕੋਲ ਪੰਥਰੀ ਹੈ ਪੰਥਰ ਨਾਲ ਦਾ ਸੁਬਾਸ਼ਾ ਰੇਣਾ ਕੁੱਕੀ ਸੂਤਾ ਉੱਥੇ ਉਹ ਬੈਨਾਮ ਉਹ ਰਜਿਸਟਰੀ ਦੇ ਪੱਟੇ ਸਾਰੇ ਬੁੱਢੇ ਦਾਲ ਕੋਲ ਨੇ ਜਿਹਨਾਂ ਤੇ ਜੁਆਇਨ ਲਿਖੀ ਹੋਈ ਹੈ ਬਿਰੀ ਹੋਈ ਹੈ ਗੁਰਦੁਆਰਿਆਂ ਨੂੰ ਫਤਿਹਗੜ ਦਾ ਹੋਵੇ ਚਾਹੀਦਾ ਹੈ ਚਾਹ ਸਾਹਿਬ ਦਾ ਹੋਵੇ ਜਾ ਲੋ ਉਹ ਚਾਂਦੀ ਦੇ ਆ ਤਾਂਬੇ ਦੇ ਪਟੇ ਦੇ ਜਿਹੜਾ ਜ਼ਮੀਨ ਲਿਖੀ ਹੋਈ ਹੈ ਉਹ ਤਾਂ ਪਟੇ ਦਾ ਸਾਡੇ ਕੋਲ ਨੇ ਜਿਹਦੇ ਕੋਲ ਰਜਿਸਟਰੀ ਆ ਮਾਲਕ ਕਬਜ਼ੇ ਕਿਰਾਏਦਾਰ ਕੋਈ ਵੈਸਾ ਦਾ ਫਿਰ ਸਾਨੂੰ ਰਸਤਾ ਦਿੰਦੇ ਰਹੇ ਗੁਰਦਵਾਰਾ ਆਖੜੇ ਦੇ ਵੀ ਨਹੀਂ ਉਹਨਾਂ ਨੂੰ ਕਿਸ਼ਾਰੇ ਦੇਣੇ ਪੈਣਗੇ ਆ ਦੇਣਾ ਉਹ ਕਿਉਂ ਦੇਣਾ ਹੋਊਗਾ ਮਾਲਕ ਨੇ ਹੋ ਹਾਈ ਕੋਲ ਦੇ ਮਾਲਕ ਬਣ ਕੇ ਹਨ ਚਾਬੀਆਂ ਫੜਾਈਆਂ ਸੀ ਉਹਦੇ ਬਾਅਦ ਜਦ ਸ਼ਾਸਤਰਾਏ ਨੇ ਜਿਹੜਾ ਅਸੀਂ ਜਵਾਹਰ ਲਾਲ ਨੇ ਬਾਲ ਕੰਨ ਕੇ ਬਾਬੇ ਚੇਸ ਨੂੰ ਦਿੱਤੇ ਰਿਹਾ ਸਰ ਕਹਿੰਦਾ ਸਰੋਹੜੀ ਕਮੇਟੀ ਬਾਲ ਕੰਨ ਜੇ ਬਣੀ ਬੱਤ ਹੈ ਬਣੀ ਦੁੱਤ ਹੈ ਇਹਨਾਂ ਨੂੰ ਮਾਲਕ ਬਣੇ ਹੀ ਨਹੀਂ ਹੋਏ ਕਿਸੇ ਉੱਤੇ ਤੱਕ ਸਿੱਖਾਂ ਨੂੰ ਨਹੀਂ ਪਤਾ ਇਸ ਗੱਲ ਦਾ ਸਰੋਹੜੀ ਕਮੇਟੀ ਨੂੰ ਬਣੀ ਮਾਲਕ ਬਣਦਾ ਤਾਂ ਇਹ ਬਰਾਬਰ ਕਮੇਟੀਆਂ ਨਹੀਂ ਹੋਈਆਂ ਜੇ ਮਾਲਕ ਹੋਵੇ ਸਾਰੇ ਗੁਰਦਵਾਰਿਆਂ ਦੇ ਵੰਡ ਤੇ ਤਾਂ ਜਾਊ ਫਿਰ ਤਾਂ ਹਰਿਆਣੇ ਵਾਲੇ ਦੀ ਪੁੱਛਦੇ ਇਹ ਆਪਣੇ ਝੂਠ ਨਾਲ ਜਿਹੜਾ ਰੇਟ ਦਾ ਬੈਲੈਂਸ ਆਪੇ ਡੇ ਜੋ ਵੀ ਗੁਰਦੁਆਰਾ ਖੜ ਬਣੂ ਕਿੱਥੇ ਦਾ ਬਣੇ ਨਿਹੰਗ ਸਿੰਘ ਦਾ ਜਿਹੜੀ ਰਸਤਾ ਆਸਦੀ ਗੱਲ ਸਾਰਿਆਂ 'ਚ ਹੋਊਗੀ ਉਹ ਚਾਹੇ ਹਵਾ ਚਲਦੇ ਹੋਣਗੇ ਕਿ ਇੱਥੇ ਦੇ ਹੋਣਗੇ ਕਿਉਂ ਪੈਟਰਨ ਉਹੀ ਚੱਲੇਗਾ ਪੈਟਰਨ ਨਹੀਂ ਬਦਲਦਾ ਇਹਨਾਂ ਦਾ ਅਸਥਾਨ ਹਰਿਆਣੇ 'ਚ ਨਹੀਂ ਹਰਿਆਣੇ ਵਾਲਾ ਅਸਥਾਨ ਇੱਥੇ ਇਹ ਸਾਡੂ ਹਜੂਰ ਸਾਹਿਬ ਤੋਂ ਵੀ ਮਿਲਦਾ ਪਟੜ੍ਹੇ ਸਾਹਿਬ ਤੋਂ ਵੀ ਮਿਲਦਾ ਰਸਤਾ ਜੇ ਕੋਈ ਲੈਣਾ ਚਾਹੇ ਕਿ ਕਿਸਾਰੇ ਜਾਈ ਦਰ ਮੈਨੂੰ ਉਹਨੂੰ ਲੈਣਾ ਪੈਣਾ ਔਰ ਬਾਕਾਇਦਾ ਲਿਖੇ ਜਾਂਦੇ ਨੇ ਜਿਹੜੇ ਇਸੇ ਨੂੰ ਸ਼ੁਰੂ ਕਰਾ ਦੇਣ। ਕੁਕੇ ਘਰ ਦੇ ਮਾਲਕ ਬਣੇ ਹੋਏ ਨੇ। ਜਿਵੇਂ ਸਰਸਤਾ ਉਹ ਕਿਹਨ ਕੋ ਜਲਦੀ ਸਾਧ ਰਹੇ। ਸਾਧਾਂ ਦੇ ਜਿਹੜੇ ਬਾਣੇ ਵਾਲੇ ਹੁੰਦੇ ਨੇ ਉਹ ਮਾਲਕ ਬਣ ਜਾਂਦੇ। ਬਾਣੇ ਦੇ ਬਨ ਸਸਤਾ ਨਹੀਂ ਰਹਿੰਦੀ। ਤਾਂ ਮੈਂ ਕਿਹਾ ਵੀ ਆ ਗੁਰਦਾਰ ਐਕਟ ਮੇਰੇ ਕੋਲ ਹੈ। ਇਹਦੇ ਤਹਿਤ ਹਾਈ ਕੋਰਟ ਦਾ ਅਪੀਲ ਰੋਲਡਸ ਲੋੜਦਾ ਆਪਣਾ ਜਵਾਬ ਦੇਣਾ ਚਾਹੀਦਾ ਜੇ ਕਾਲੀ ਕਬਜ਼ਾ ਲੈਣ ਆਉਣਗੇ ਬੰਨ ਉਹ ਲੜਪਾਂਗੇ ਪਰ ਕਬਜ਼ਾ ਤੇ ਲੈਣ ਸਰਕਾਰ ਆਉਂ ਪੁਲਿਸ ਤਾਂ ਆਪਣੀ ਹੈ ਪੁਲਿਸ ਆਪਣੀ ਆਪਾਂ ਪਾਗਲ ਹੂਦ ਨੀਤੀ ਆ ਰਾਜਨੀਤੀ ਦੋਹੇ ਦੇਖਲਾ ਹੈ ਬਾਦ ਉਹ ਮਿੰਟ ਬਹਿ ਗਿਆ ਦਰਖਾਇ ਫਾਬਾ ਜੇ ਸੋਹ ਕਹਿੰਦਾ ਜਵਾਬ ਲੋ ਜਿਹੜੀ ਪਚੰ ਪਚੰਗੀ ਗੈਰ ਦੱਸੇ ਬਤੂ ਮੈਂ ਸਾਰਾ ਛੋਟਾ ਸੀ ਨਾ 25 ਸਾਲ ਦੀ ਤਾਂ ਹੋਣੀ ਸੀ ਸਾ ਵੀ 26 ਸਾਲ ਦੀ ਕਿਉਂ ਸਾਈਟਾਈ ਦਾ ਜਨਮ ਸੀ 36 ਨੂੰ 72 ਆ ਅਵੈਦੀਗ ਹੋ ਲਈਏ ਅ ਸਮਝੋ 36 ਤੋਂ ਉਪਰ ਵੀ 10 ਸਾਲ ਕੱਟ ਕੁਝ ਜਵਾਬ ਦੇ ਸੇ ਹੋਵੇ ਤਾਂ ਦੱਸਣ। ਨਾ ਹੋਵੇ ਕਦੇ ਕੋਈ ਦੱਸਣ। ਫੇਰ ਸਾਡੇ ਵਾਲੇ ਗਰੁੱਪ ਵਾਲੇ ਬੋਲੇ। ਨਹੀਂ ਜੀ ਸੰਤ ਕਹਿਣ ਲੱਗੇ ਕਿ ਆਪਣੇ ਸਿੰਗਰ ਪੜਿਆ ਲਿਖਿਆ। ਇਹ ਲਾਲਾ ਪੜਾਈ ਦੀ ਭਾਈ ਕਾਲਜਾਂ ਦੀ ਸਕੂਲਾਂ ਦੇ ਵਿੱਚ ਅਦਾਲਤਾਂ ਦੀ ਆਪਣਾ ਤਾਂ ਗੁਰਬਾਣੀ ਜਾਣਦੇ ਆਪਾਂ। ਇਹ ਨਹੀਂ ਯੋਗ ਹੈ ਠੀਕ ਹੈ। ਚਲੋ ਤੋਗਰੇ ਹੋਰ ਤਾਂ ਦੀ ਕਹਤੀ ਸਾਡੇ ਵਾਲੇ ਨੇ ਬੈਠੇ ਸੀ ਉਹੀ ਆਪਣੇ ਉੱਪਰ ਇੱਕ ਨੂਰ ਦਾ ਕੰਮ ਕਰੂਣ ਵਾਲਾ ਕਿਹਾ ਇਹਦਾ ਨੂਰ ਹਥੇ ਬਿਨਾਂ ਲਈ ਜਾਈਦਾ ਪਰ ਜਦ ਆਪਾਂ ਕਾਨੂੰਨ ਨਾਲ ਜਿੱਤਦੇ ਆ ਫਿਰ ਆਪਾਂ ਕੋ ਲੜੀ ਲੜ ਲਿਓ ਤੁਸੀਂ ਜੇ ਬੇੜਾ ਆ ਜਾਂ ਸਰਕਾਰ ਸਾਡੇ ਨਾਲ ੱੱਕਾ ਕਰੂ ਫੇਰ ਲੜ ਲਿਓ ਅੱਜੇ ਤੁਸੀਂ ਕਹੂ ਕਹਿਦੇ ਹੋ ਸਰਕਾਰ ਤਾਂ ਸਾਡੇ ਵੱਲ ਹੈ ਕਿ ਫੈਸਲਾ ਹੀ ਸਾਡੇ ਹੱਕ ਚ ਹੋ ਗਿਆ ਇਹ ਸਰਕਾਰ ਅਦਾਲਤ ਨੇ ਕਹੇ ਤਾਂ ਵੀ ਇਹ ਵਾਲਕ ਨਹੀਂ ਅਸੀਂ ਗੁਰਦਾਰਾ ਕਮੇਟੀ ਪ੍ਰਬੰਧਕ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਮਾਲਕ ਨਹੀਂ ਹੈ ਆਪਣਾ ਪ੍ਰਬੰਧ ਸੰਭਾਲਿਆ ਹੈ ਮੈਨੇਜਰ ਬਣਾਇਆ ਹੈ ਸਾਡੇ ਮਰਜੀ ਖੋਲੀ ਅਸੀਂ ਜਿਹੜਾ ਗੁਰਦਾਰਾ ਐਕਟ ਬਣਾਇਆ ਉਹ ਤੇ ਕਿਸੇ ਜ਼ਹੀਰਦਾਰ ਦੇ ਸਾਈਨ ਦੀ ਹੈ ਗੁਰਦਾਰ ਦੇ ਸਾਈਨ ਨਹੀਂ ਹੁੰਦੇ ਅਸੀਂ ਪ੍ਰਮਾਣਿਤ ਨਹੀਂ ਕੀਤਾ ਹੋਇਆ ਅਕਾਲੀਆ ਦੇ ਪ੍ਰਮੋਡ ਕੀਤਾ ਮਾਲਕੀ ਥੋੜੀ ਬਣੀ ਜੀ ਐਕਟ ਵੀ ਅਸੀਂ ਦਾ ਪ੍ਰਮਾਣਿਤ ਕੀਤਾ ਹੈ ਜਾਦਾ ਚੱਲੀ ਜਾਵੇ ਸੰਗਤ ਦੀ ਚੀਜ਼ ਐ ਸੰਗਤ ਦਾ ਪੈਸਾ ਐ ਸੰਗਤ ਦੇ ਨੇ ਹਿਸਾਬ ਲੈ ਲੈ ਮੈਨੂੰ ਕੀ ਰੋਣ ਇਹ ਗਰੂ ਲੈ ਰੂਗਾ ਸੰਗਤ ਲੈ ਆਪਾਂ ਰਾਜਨੀਤੀ ਦੀ ਅਲੱਗ ਹੈ ਧਰਮ ਨੀਤੀ ਧਰਮ ਦਾ ਪ੍ਰਚਾਰ ਜਲਦ ਕਰਦੇ ਫਿਰ ਉਹ ਕਹਿੰਦਾ ਹਾਂ ਇਹੀ ਦੱਸੇ ਕੀ ਐ ਫਿਰ ਮੈਂ ਕਹਿੰਦਾ ਰੋਟਸ ਦਾ ਜਵਾਬ ਦੇਣੇ ਗਏ ਫਿਰ ਅਸੀਂ ਜਵਾਬ ਦਿੱਤੇ ਕੇਸ ਵੀ ਚੱਲਿਆ ਫਿਰ ਜਾ ਬਾਬਾ ਜੇਸੇ ਚੜ੍ਹਾਈ ਕਰ ਗਿਆ ਤੈਨੂੰ ਦਸਾਲ ਅਸੀਂ ਕੇਸ ਚਲਾਇਆ ਤਾਰ ਤੱਕ ਇਹ ਚੱਲਦਾ ਰਿਹਾ ਹਾਈ ਕੋਰਟ ਇਹਨੇ ਫਿਰ ਜਦ ਇਹ ਆ ਗਿਆ ਨਾ ਇਹ ਕਹਿੰਦਾ ਅਸੀਂ ਤਰੀਕਾ ਤੇ ਲਈਏ ਕਿ ਤਰਫਾ ਕਾਰਵਾਈ ਹੋਗੀ ਉੱਥੇ ਫਿਰ ਜਦੋਂ ਲੈਣ ਆਇਆ ਕੱਢ ਜਿਹੜੇ ਫੋਜਾ ਇਕੱਠੀਆਂ ਕਰ ਲਿਓ ਪਿਆਰ ਹੋ ਗਿਆ ਨਾ ਝਾਪਾ ਖੜਾ ਫਿਰ ਖਾਂ ਬੋਲੀ ਹੋ ਗਲਤੀ ਕੀਤੀ ਮੈਂ ਫਿਰ ਕਿਹਾ ਸੀ ਮੈਂ ਕਹਾਂ ਦੇਖੋ ਰਾਜਨੀਤੀ ਹੁ ਦੂਜੀ ਦਾ ਰਾਜਨੀਤੀ ਦੀ ਫਤੇਸਵਾਰ ਇਹਨਾਂ ਦਾ ਦੋਹਾਂ ਨਖਰੇ ਸੇ ਉਹ ਚੱਲਦਾ ਸੀ ਪਲੇਸ ਇਹ ਰਾਣੀ ਲੜੀ ਤੇ ਹਾਂ ਨਾਲ ने ਨੇ ਨੋਨੇ ਤੁਹਾਡੇ ਕੋ ਕੱਲੇ ਕੱਲੇ ਲੋੜੇ ਮੇਰੀ ਸਾਈਡ ਤੋਂ ਉਹ ਕਹਿੰਦਾ ਮੇਰੀ ਸਾਈਡ लड़ाई ਤੇਰਾ ਵੀ ਲੜਾਈ ਚ ਅਸੀਂ ਆਪੇ ਉੱਤੇ ਆ ਉਹਦਾ ਫੈਸਲਾ ਤੁਸੀਂ ਇਹਨਾਂ ਦੀ ਲੜਾਈ ਚ ਇਹਨਾਂ ਦੀ ਲੜਾਈ ਦੇ ਵਿੱਚ ਹੀ ਫਿਰ ਜਾਦੇ ਗਿਆ ਕਿ ਜੱਟ ਜੀ ਜਦ ਐਮਰਜੈਂਸੀ ਲੱਗੀ ਹੈ ਜਿਆਦਾ ਖਾਲੀ ਦਾਦਾ ਸਮਝਾਤਾ ਹੋ ਚੁੱਕਿਆ ਸੀ ਕਿਰੋ ਦਾ ਕਿਰੋ ਦਾ ਬੁੜੇ ਦਾਦਾ ਹੂੰ ਤਾਂ ਐਂ ਗਿਆ ਸੀ ਐਮਰਜੈਂਸੀ ਦੇ ਵਿੱਚ ਉਹ ਇਧਰ ਆਨੇ ਇਹਨਾਂ ਨੂੰ ਨਹੀਂ ਮੜਿਆ ਉਹ ਵੀ ਇਹਦੀ ਗਲਤੀ ਸੀ ਵਾਹ ਜਦੋਂ ਅਸ ਲੋ ਜੁੜੇ ਹੋਏ ਨੇ ਤੇ ਰੇੜੇ ਜਾਓ ਇਹ ਤਾਂ 100 200 ਆਪ ਵੱਡਣ ਦੇ 5 400 ਥੋੜੇ ਚੋਂ 100 ਮਰ ਜੂ ਹੋਰ ਅਸੀਂ ਆਪ ਖੜਾ ਹੋ ਜੂ ਇਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਬਾਕੀ ਖੜ ਲੇ ਸਾਰੇ ਉਹਦੇ ਬਾਅਦ ਫਿਰ ਇਹਨੂੰ ਕਿਵੇਂ ਕਾਬੂ ਕੀਤਾ ਉਹ ਗੱਲ ਅਲੱਗ ਹੈ ਇਹਨੂੰ ਕਿਵੇਂ ਕਾਬੂ ਕੀਤਾ ਉਹ ਗੱਲ ਅਲੱਗ ਹੈ ਏਸੀ ਰਾਜਨੀਤੀ ਨਾਲ ਉਹ ਵੀ ਕਾਮਯਾਬ ਹੋਈ ਧਰਮ ਨਹੀਂ ਦੀ ਹੁੰਦੀ ਐ ਅਸੀਂ ਧਰਮ ਦੀ ਗੱਲ ਕਰਦੀ ਐ ਕਦ ਕਰਨੀ ਐ ਕਦ ਨਹੀਂ ਕਰਨੀ ਇਹਦਾ ਟਾਈਮ ਸਾਡੇ ਕੋਲ ਠੀਕ ਠਾਕ ਜਿੰਨਾ ਜਨੇ ਠੀਕ ਟਾਈਮ ਦੀ ਅਸੀਂ ਡਿਸਕਲੋਜ਼ ਕਿਉਂ ਨਹੀਂ ਕੀਤੀ ਹਾਲ ਤੀ ਮੈਂ ਕਿਉਂ ਨਹੀਂ ਕੀਤਾ ਸਾਰੇ ਕਿਉਂ ਫੰਗ ਭਗਾ ਕੇ ਬਹਿ ਗਏ ਮੈਂ ਕਿਹਾ ਸਾਰੇ ਗੱਲ ਸਾਡੇ ਕੋ ਪੂਰੀ ਨਹੀਂ ਸੀ ਪੂਰੀ ਮੁਕੰਮਲ ਗੱਲ ਨਹੀਂ ਸੀ ਸੀ ਦੂਸਰੀ ਇਹ ਜਦੋਂ ਚੋਰ ਡਾਕੂ ਇੱਕ ठा ਹੋਣ ਤਾਂ ਡਿਫੈਂਸਿਵ ਹੋ ਗਏ ਰਹੀਦਾ ਅਨੰਦਪੁਰ ਸਭ ਨੂੰ ਆਪਣੇ ਕਿਲੇ ਚ ਆਗਦ ਇਕੱਠੇ ਕਰੀਏ ਠੀਕ ਹੈ ਇਹ ਧਰਮ ਨੀਤੀ ਕਦੋਂ ਤੁਸੀਂ ਬੋਲਣ ਕਿਵੇਂ ਬੋਲਣ ਇਹ ਧਰਮ ਨੀਤੀ ਹੈ ਆ ਕੀ ਬੋਲਣਾ ਹੈ ਵੀ ਕੀ ਬੋਲਣਾ ਕਦੋਂ ਬੋਲਣਾ ਕਿੱਥੋਂ ਕੱਲ ਸ਼ੁਰੂ ਕਰੇ ਹੈ ਜੇ ਧਰਮ ਹੈ ਤਾਂ ਨੇ ਚੀਜ਼ਾਂ ਨਹੀਂ ਆਉਂਦੀਆਂ ਤੁਸੀਂ ਇਹ ਚ ਕਹੋਗੇ ਨਹੀਂ ਦੱਸੋ ਮੈਨੂੰ ਸਲਾਹਾਂ ਦਿੰਦੇ ਰਹਿੰਦੇ ਨੇ ਮੈਨੂੰ ਪਤਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਜਿਹੜੇ ਮੈਨੂੰ ਸਲਾਹ ਦੇ ਉਹਨਾਂ ਨੂੰ ਆਪ ਨਹੀਂ ਪਤਾ ਵਿਚਾਰੇ ਨੂੰ ਕੁਝ ਆਪਣੀ ਅਕਲ ਮੁਤਾਬਕ ਸਲਾਹ ਦਿੰਦੇ ਨੇ ਇਸ ਕਰਕੇ ਉਹ ਟਾਲ ਦਾ ਚਲਾਇਆ ਹੋਇਆ ਉਹ ਟਾਲ ਦਾ ਚਲਾਇਆ ਇਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਪਤਾ ਵੀ ਮੈਨੂੰ ਕੁਝ ਨਹੀਂ ਪਤਾ ਲੈਵਲ 'ਚ ਨੀਤੀ ਯੁੱਧ ਉਹਨਾਂ ਲੋਕਾਂ ਦੇ ਜਿਹੜੇ ਦਸ ਪਾਸ਼ਾਤ ਰਹੇ ਹੋਏ ਨੇ ਦੇ ਪੜਾਏ ਹੋਏ ਨੇ ਬੜੇ ਪ੍ਰਚਾਰ ਪੁਛਤਾ ਹੋਈਏ ਦੇ ਸਾਰੀਆਂ ਪੰਜ 100 ਪੁਛਤ ਹੋ ਗਈ ਅਮਰਦਤ ਨੂੰ ਕਿਨੇ ਪੜਾਇਆ ਖਲਦਾਲ 'ਚ ਫੜ ਕੇ ਆਇਆ ਹੋਇਆ ਬੇਦਰੂ ਕਿਹਣਾ ਬਣਾਦਾ ਵੇਰ ਦੇ ਖਾਦਾ ਹੁਣ ਕਿਵੇਂ ਡਿਫੈਂਸਿਵ ਹੋਇਆ ਵਾ ਉਹ ਹਾਂ ਨੀਤੀ ਦਿਖਦੀ ਹੋਦੀ ਨੀਤੀ ਆ ਪੂਰੀ ਭਾਇ ਉਹਦੀ ਚੁੱਪਦੀ ਯੂਪੀ ਵਾਲਾ ਹਾਲ ਉਹ ਪੰਜਾਬ ਚ ਕਾਂਗਰਸ ਦਾ ਜਿਵੇਂ ਜੱਟਾ ਦੇ ਦਿੱਤਾ 13 ਨੰਬਰ ਦੇ ਚਲੀ ਜਾਊਗੀ ਕਾਂਗਰਸ ਹੂੰ ਮਾਇਆ ਉਹਦੀ ਉਧਰ ਤੇ ਆਣੇ ਯੋਗੇ ਉਹ ਵੀ ਮਰ ਕੇ ਯੁੱਧ ਨੀਤੀ ਦਾ ਫਿਰ ਹਾਂ ਉਹ ਯੁੱਧ ਨੀਤੀ ਯੁੱਧ ਧਰਮ ਨੀਤੀ ਹੈ ਸਾਡੀ ਧਰਮ ਰੀਤੀ ਹੀ ਯੁੱਧ ਨੀਤੀ ਸਾਡੀ ਡਿਫੈਂਸ ਹੈ ਨੀਤੀ ਹੈ ਉਹ ਦੂਜੇ ਹਾਂ ਅਬਲਾਰੀ ਅਸੀ ਕਿਸੇ ਦੇ ਕਰਨਾ ਵਗੈਰਾ ਉਸੇ ਕੋ ਰਾਜ ਕਰਨ ਅਸੀ ਕੋ ਰਾਜ ਕਰਨ ਜਦੋਂ ਰਾਜ ਕਰਨ ਦੀ ਲਾਲਸਾ ਪੈਦਾ ਹੋ ਗਈ ਤਾਂ ਸਾਰੇ ਹੀ ਕੁਝ ਛੁੱਟ ਗਏ ਤਾਂ ਰਣਨੀਤੀ ਦੇ ਖਦਮ ਹੋ ਗਈ ਰਾਜਨੀਤੀ ਇੱਥੇ ਧਰਮ ਨੀਤੀ ਪ੍ਰਧਾਨ ਰਾਜਨੀਤੀ ਔਰ ਯੁੱਧ ਨੀਤੀ ਉਹਦੀ ਸਹਾਇਕ ਨੀਤੀ ਹੁੰਦੀ ਹੈ ਸਹਾਇਕ ਧਰਮ ਨੀਤੀ ਦੀ ਧਰਮ ਨੀਤੀ ਉਹ ਧਰਮ ਨੀਤੀ ਕਾਮਯਾਬ ਹੈ ਜਿਹੜੀ ਰਾਜਨੀਤੀ ਔਰ ਯੁੱਧ ਨੀਤੀ ਦੋਏ ਉਹਦੇ ਮਦਦ ਕਰਦੀਆਂ ਨੇ ਉਹਦੇ ਅਨੁਸਾਰ ਚਲਦੀਆਂ ਨੇ ਇਹਨਾਂ ਤਾਂ ਵੇਲੇ ਨਹੀਂ ਆਪ ਸਿੱੱਚੀ ਜੇ ਮੈਂ ਇੱਕ ਕਿਤਾਬ ਲਿਖਦਾ ਨਾ 500 300 ਪੰਨੇ ਦੀ ਬੰਬ ਚੱਲ ਜਾਊਗਾ ਇਹਨਾਂ ਦੇ ਅਕਾਲੀਆਂ ਦੇ ਕਿਹਦਾ ਦਿਮਾਗ ਐਡਾ ਮੈਨੂੰ ਪਤਾ ਜਿੱਦੇ ਜੋਗੇ ਹੈਗੇ ਨੇ ਸਾਰੇ ਜਿਹੜੇ ਰਾਈਟਰ ਨੇ ਇਹ ਇਹਦੇ ਨੀਤੀ ਤਰੁਜੀਤੀ ਗਾਣ ਆਹ ਜਿਹੜੇ ਲਖਾਰੀ ਆਉਂਦੇ ਨੇ ਅਖਬਾਰਾਂ 'ਚ ਮੈਂ ਵੀ ਤਾਂ ਪੜਦਾ ਹੀ ਨਾ ਰੋਜ ਕਿੰਨਾ ਗਨਾਂ ਦਾ ਲੈਵਲ ਐ ਕਿਉਂਕਿ ਇਹਨਾਂ ਨੂੰ ਖਿੜਕੀਆਂ ਨਹੀਂ ਖੁੱਲੀਆਂ ਹੋਈਆਂ ਉਹ ਖਿੜਕੀ ਨਹੀਂ ਖੁੱਲਣੀ ਹੋਈ ਬੁੱਧੀ ਵਾਲੀ ਇਹਨਾਂ ਦੀ ਇਹ ਸਿਰ ਪੜਦੇ ਨੇ ਉਹਨਾਂ ਲੋਕਾਂ ਨੂੰ ਪੜਦੇ ਨੇ ਜਿਹੜੇ ਰਾਜਨੀਤੀ 'ਚ ਕਾਮਯਾਬ ਹੋਏ ਨੇ ਧਰਮ ਨੀਤੀਦਾਂ ਨੂੰ ਭਾਇਓ ਨਹੀਂ ਯੁੱਧ ਨੀਤੀ ਧਰਮ ਨੀਤੀ ਰਾਜਨੀਤੀ ਇਹ ਤਿੰਨ ਤਿੰਨ ਅਲੱਗ-ਅਲੱਗ ਵਿਸ਼ੇਰੇ ਇਹਨਾਂ ਦੇ ਆਮ ਰਾਈਟਰ ਦੇ ਅਲੱਗ-ਅਲੱਗ ਵਿਸ਼ੇ ਜਿਹੜਾ ਯੁੱਧ ਨੀਤੀ ਦਾ ਮਾਹਰ ਹੈ ਉਹਦੇ ਕੋਲ ਰਾਜਨੀਤੀ ਨਹੀਂ ਹੁੰਦੀ ਜਿਹੜਾ ਰਾਜਨੀਤੀ ਦਾ ਮਾਹਰ ਹੁੰਦਾ ਉਹ ਯੁੱਧ ਨੀਤੀ ਨਹੀਂ ਹੁੰਦੀ ਯੋਧਾ ਦਿੱਤੀ ਹੋਊਗੀ ਫੌਜਾਂ ਦੇ ਜਰਦੈਲ ਵਿਸ਼ਾਲ ਡੱਗ ਠੀਕ ਹੈ ਨੀ ਉਹ ਜਰਦੈਲ ਇਕੱਠੀਆਂ ਚਾਹੀਦੀ ਹਾਂ ਹਾਂ ਇੱਥੇ ਤਿੰਨੇ ਇਕੱਠੀਆਂ ਤਿੰਨ ਇਕੱਠੀਆਂ ਉਹਦੇ ਕੋ ਹੁੰਦੀਆਂ ਨੇ ਇਹਦੇ ਕੋ ਧਰਮ ਦਿੱਤੀ ਸਹਾਇਕ ਉਹਦੀਆਂ ਇਹ ਤਾਂ ਉਹਦੇ ਵਿੱਚ ਆ ਗਈ ਉਹ ਕਹਿੰਦੀ ਹੈ ਪੁੱਤਰੀ ਤੂੰ ਕਾਲ ਕਾ ਹੋ ਹੋ ਕਰਨ ਵਾਲੀ ਸ਼ਕਤੀ ਉਹ ਰੀਨੋ ਹੀ ਹੋਸਤ ਯੁੱਧ ਕਰਨ ਵਾਲੀ ਸ਼ਕਤੀ ਆ ਕਾਲ ਕਾਲ ਕਾਲ ਕਾਲ ਯੁੱਧ ਵਿੱਚ ਕਾਲਿਆ ਹੁੰਦਾ ਹੁੰਦਾ ਯੁੱਧ ਵਿੱਚ ਹੋਰ ਕੀ ਹੁੰਦਾ ਕਾਲ ਉਹ ਕਹਿੰਦੀ ਮੈਨੂੰ ਹੁਕਮ ਦੇ ਕਰਦੀ ਨਹੀਂ ਤੈਨੂੰ ਹੁਕਮ ਫੈਸਲਾ ਮੈਂ ਕਰੂ ਕਾਲ ਕੀ ਕਰਨਾ ਧਰਮ ਕਰੂਗੀ ਫੈਸਲਾ ਇਹ ਬਬੇ ਕਰੂਗੀ ਤੂੰ ਤਾਂ ਬਾਹਰ ਜੜਦੀ ਜਿਹੜਾ ਮੂਰੇ ਆ ਗਿਆ ਵੜ ਦੋ ਬਸ ਅਜੇ ਮੈਂ ਅੱਜ ਆਪਣੇ ਮੁੰਡੇ ਬਹਿ ਹੜਾ ਦੋ ਬਸ ਜਿਹੜਾ ਸਾਡਾ ਬੋਨਸ ਦਾ ਹੜਾ ਦੋ ਜੁਗਲੀ ਨੀਤੀ ਹੈਗੀ ਉਹ ਹਾਂ ਬਾਕੀ ਹੈ ਹੀ ਨਹੀਂ ਨੀਤੀ ਵੀ ਨਹੀਂ ਚੱਲਦੀ ਹੈ ਉਹ ਵੀ ਜੇ ਕਰਨਾ ਤਾਂ ਨੀਤੀ ਜਾਈਗੀ ਨੀਤੀ ਕਰੀ ਖਾਲੀ ਤੇ ਨੀਤੀ ਦਾ ਥੀਡ ਯੁੱਧ ਤਾਂ ਕਲਦੀ ਸ਼ਮਤਾ ਸੀ ਨੀਤੀ ਨਹੀਂ ਸੀ ਉਹਦੇ ਹੋਂਦ ਪੜਾਏ ਕਿ ਨੀਂ ਦਿੱਤੀ ਹੁ ਦਿੱਤੀ ਹੈ ਲਾ ਦੇ ਗੋਲ ਦਿੱਤੀ ਹੈ ਲਟੇ ਗੋਲ ਪਰ ਨਾਲ ਕੋ ਨੀਂ ਦਿੱਕ ਨਾ ਦਿੱਤੀ ਜੰਮਿਆ ਦਾ ਬਾਬੜਾ ਜੋ ਆ ਜੱਬੇ ਅਸੀਂ ਚੋ ਆ ਜਿਹੜਾ ਮਾਸਰੀ ਘੜ ਬਾਬੜਲੇ ਹੋ ਉਹ ਕੋ ਇਹ ਨੀਂ ਦਿੱਤੀ ਕਿ ਤੁਹਾਂ ਕੀ ਬੇਦਾਰ ਮੈਨੂੰ ਹੁੰਦੀ ਹੈ ਨਾ ਧਰਮ ਰੀਤ ਨਾ ਇਹੋ ਤੇ ਨਾ ਰਾਜਨੀਤੀ ਤੇ ਨਹੀਂ ਸੀ ਉਹਦੇ ਕਿੰਨਾ ਤਾਂ ਖਾਲੀ ਸੀ ਨਹੀਂ ਤਾਂ ਕੱਲੀ ਕੱਲੀ ਗਲਤੀ ਦਾ ਸਾਹਮਣੇ ਕਿੱਥੇ ਕੀ ਪਹਿਲੀ ਗੱਲ ਉਹਨੇ ਸੰਗਤ ਨੂੰ ਸਲਾਹ ਤੇ ਬਿਨਾ ਫੈਸਲਾ ਲਿਆ ਖਾਲਸਾ ਦਾ ਉਹਦੇ ਪੁੱਛਦਾ ਕੋਈ ਬਾਦਲ ਨੂੰ ਕਿਉਂ ਪੁੱਛਦੇ ਜੀ ਟੋੜੇ ਨੂੰ ਕਿਉਂ ਟੋੜਾ ਲੋਕਾਂ ਦੀ ਸਲਾਹ ਨਾਲ ਸਾਰਿਆਂ ਨੂੰ ਮਿਲ ਕੇ ਫੈਸਲੇ ਕਰਦਾ ਤਾਂ ਉਹਨੇ ਕੱਲੇ ਨੇ ਫੈਸਲੇ ਭਿੰਡਾਲੇ ਕੱਲੇ ਬੱਖੀ ਚ ਜਿਵੇਂ ਮੱਖਣ ਜੋ ਵਾਲ ਕੱਢ ਕੇ ਰੱਖਦੇ ਲੋਕਾਂ ਦੇ ਰੱਖਦੇ ਨਾ ਕੋਈ ਨਹੀਂ ਪੁੱਛਦਾ ਉਹ ਟਿਊਰੀ ਪੁੱਛਦਾ ਉਹਨੇ ਕਿਸੇ ਨੂੰ ਵੀ ਪੁੱਛਿਆ ਜਿਹੜਾ ਸੰਧ ਤੁੜ ਨਹੀਂ ਪੁੱਛਦਾ ਸਭ ਤੋਂ ਉੱਨੀ ਨਹੀਂ ਪੁੱਛਦੀ ਤੁਹਾਡੇ ਸਾਹਮਣੇ ਨਹੀਂ ਹੁਣ ਉਹਨੇ ਅਮਰੀਕਾ ਦਾ ਸਲਾਹ ਕੀਤੀ ਸੀ ਜਾਂ ਉਹਨੇ ਖਾਲਸਾ ਰੱਖਿਆ ਅਮਰੀਕਾ ਵਾਲਿਆਂ ਨੇ ਕੀਤੀ ਹੋਗੀ ਉਹਨੂੰ ਚਲਾ ਜਾਓ ਜਿਹੜੇ ਅਮਰੀਕਾ ਵਾਲਿਆਂ ਦੇ ਕਹੇ ਤੇ ਪਾਕਿਸਤਾਨ ਵਾਲਿਆਂ ਦੇ ਕਹੇ ਤੇ ਗੱਲ ਕਰਨਗੇ ਜਦ ਪਾਕਿਸਤਾਨ ਦਾ ਜਿੰਨਾ ਚਿਰ ਲੋੜ ਹੈ ਥੋੜੀ ਬੰਦ ਕਰੂ ਜਦ ਉਹਦੀ ਲੋੜ ਪੂਰੀ ਹੋ ਗਈ ਤੁੰਨ ਛੱਡ ਕੇ ਇਹਨੂੰ ਦੇ ਦਿੰਦੇ ਇਹ ਰਾਜਨੀਤੀ ਹੈ ਆਪਣੇ ਜਿੰਨਾ ਚਿਰ ਉਹਨੂੰ ਲੋੜ ਹੈ ਤੁਹਾਡੀ ਥੋੜੀ ਬੰਦ ਕਰੂ ਜਦ ਉਹਦੀ ਲੋੜ ਪੂਰੀ ਹੋ ਗਈ ਉਹ ਜਿਹੜੀ ਉਹਦੀ ਰੌਲਾ ਠੀਕ ਹੋ ਗਿਆ ਤੁੰਨ ਛੱਡ ਕੇ ਪਰ ਇਹਨੂੰ ਕਦੇ ਕਿਰਨ ਤੁਹਾਡਾ ਕਿਰਨ ਇਹ ਯੁੱਧ ਨਹੀਂ ਦੀ ਤੁਸੀਂ ਕਿਦੇ ਸਹਾਰੇ ਯੁੱਧ ਕਰਦੇ ਹੋ ਕਦੇ ਵੀ ਕਿਸੇ ਦੇ ਸਹਾਰੇ ਡਿਪੈਂਡੈਂਟ ਹੋ ਕੇ ਜੰਗ ਨਹੀਂ ਕਰ ਲਈ ਗਈ ਹਾਂ ਉਹਨੇ ਜਦ ਮਰਜੀ ਖਿਚਲੀ ਤੁਹਾਡੀ ਤੁਸੀਂ ਕਿਹਦੇ ਹੱਥ ਰਖਾਉਗੇ ਬਗਾਨੀਆਂ ਬਸਾਕੀਆਂ ਤੇ ਨਹੀਂ ਭੱਜਿਆ ਜਾ ਸਕਦਾ ਜੇ ਤੁਸੀਂ ਰੇਸ ਲੜ ਨਹੀਂ ਗਏ ਬਸਾਕੀਆਂ ਰੇਸ ਲੜੀ ਜਾ ਸਕਦੀ ਤਾਂ ਬਸਾਕੀਆਂ ਤੇ ਰੇਸ ਲੜਦਾ ਸੀ ਪਗਾਨੀਅਤ ਸਰਕਾਰ ਕੋ ਟੈਂਕ ਕਿੰਦਰੋਂ ਘੁੱਸ ਤੂ ਉਹਦੇ ਨੂੰ ਪਕਾ ਲੈਣ ਲੱਗੇ ਸੁਹਰਾਂ ਦੇ ਪਾਗਲੇ ਹੀ ਪਰ ਹੁੰਦੀ ਸੀ ਭਾਈ ਨਾ ਸੌਂ ਰਿਹਾ ਹੈ ਭਾਈ ਨਾ ਸੌਂ ਰਿਹਾ ਜਿਹੜੇ ਮਗਲ ਲੱਗੇ ਬੇਹੋਸ਼ੀ ਲੱਗੇ ਲੱਗੇ ਵਗਰ ਧਿਆਨ ਚੋਂ ਨਹੀਂ ਲੱਗੇ ਉਹ ਇਹਨਾਂ ਕੋਲ ਯੁੱਧ ਨੀਤੀ ਜਿਹੜੇ ਸਿਆਣੇ ਨੇ राजनीति और ਨੀਤੀ ਪ੍ਰਾਣੇ ਹਮਾ को ਤਦੇ ਸੀ ਇਹਦੇ ਕੋਲ ਧਰਮ ਨੀਤੀ ਹੈ ਰੀ ਖਤਮ ਹੋ ਗਈ ਸਾਰਿਆਂ ਜੀ ਧਰਮ ਭੁੱਲ ਗਏ ਧਰਮ ਨਹੀਂ ਜਦ ਧਰਮ ਨੀਤੀ ਭੁੱਲ ਜਾਂਦੇ ਨੇ ਰਾਜਨੀਤੀ ਬਾਹਰ ਹੋ ਜਾਂਦੀ ਹੈ ਫੇ ਧਰਮ ਕੋ ਹੁੰਦਾ ਹੈ ਆਦਮੀ ਤੇ ਸੰਤਾ ਸਿੰਘ ਤੋਂ ਬਾਅਦ ਇਹ ਵੀ ਦੋ ਪਾਰਟੀਆਂ ਬਣ ਗਈਆਂ ਕੋਈ ਨਾ ਪਾਰਟੀ ਵੱੜਦੀ ਤੇ ਕਈ ਵਾਰ ਵੱਡੀ ਜਾਂਦੀ ਪਹਿਲਾਂ ਵੀ ਕਈ ਵਾਰ ਵੱੜਦੀ ਜਾਂਦਾ ਪੰਜ ਚਾਰ ਹੱਥ ਜੀ ਬਲਕੀਰ ਤੁਨੋ ਜੇ ਬੈਠਾ ਮੱਕੜ ਕਾਇ ਬੈਠੇ ਸਰ ਓਰੇ ਵਾਲੇ ਜਿਹੜੀ ਪਾਰਟੀਆਂ ਦੀ ਵੱੜਦੀਆਂ ਇਹ ਪਾਰਟੀਆਂ ਸਿਆਸੀ ਪਾਰਟੀਆਂ ਨਹੀਂ ਤਾਂ ਘੋੜੇ ਫੇਰਦੇ ਬੰਦੇ ਸਾਰੇ ਬਾਹਰ ਤਾਂ ਨਿਕਲੇ ਕੇ ਦਿਖਾ ਦੇ ਬਹਲੇ ਕੱਢਣੇ ਪੈਣਗੇ ਇਹ ਤਾਂ ਫੌਜ ਆ ਬਾਹਰ ਰਾਜ ਉਹਦਾ ਹੁੰਦਾ ਜਿਹੜਾ ਜਿਹੜਾ ਬਾਹਰ ਦੀ ਨਿਕਲ ਸਕਦਾ ਰਾਜਗੜ੍ਹ ਐ ਰਾਜਗੜ੍ਹ ਐ ਰਾਜਗੜ੍ਹ ਬੈਠ ਗਿਆ ਰੀਸ ਤੇ ਬਲਵੀ ਸਿੰਘ ਆਪ ਸੁਰੱਖਿਆ ਚ ਸਰਗਫਤ ਉਹਦਾ ਉਹਦਾ ਰਾਜ ਬਲਵੀ ਸਿੰਘ ਨੇ ਕੰਦ ਦਸਾਰ ਜਿਹੜਾ ਬਾਹਰ ਉੱਥੇ ਮਹਿਲਾ ਹੂਗਾ ਲੋਕੀਨ ਉਹ ਦੇਣਗੇ ਬਾਦਲੇ ਪਿਛਿਆ ਤੱਕ ਚੱਲਣ ਲੱਗ ਉਹ ਨੂੰ ਵੋਟਾ ਜੇ ਕੱਲੋ ਜੇ ਬੀਜੇਪੀ ਵਾਲੇ ਉਹਨੇ ਗੱਲ ਤਾਂ ਬੜੀ ਦਾ ਕੇ ਪਰਿਵਹਨ ਯਾਰ ਵੀ ਨਹੀਂ ਛੇ ਵੀ ਨਹੀਂ ਉਹਨਾਂ ਨੂੰ ਹਾਵੀ ਕਰਾ ਦੇਣਾ ਬਲਵੀਰ ਸਿੰਘ ਨੂੰ ਅੰਦਰ ਹਮੇਸ਼ਾ ਵਾਸਤੇ ਗਿਆ ਸਾਸਾ ਤਾਂ ਜੀ ਅਸਲੀ ਗੇ ਹਾਰ ਉਹ ਲੋਕਾ ਬੀਜੇਪੀ ਵਾਲੇ ਘਮੋੜ ਨਹੀਂ ਕਹੁੰਦੇ ਜਿੱਥੇ ਬਾਦਲ ਉਹ ਟੁੱਟ ਗਏ ਕੋਈ ਗਰੁੱਪ ਹਕੂਮਤ ਦੀ ਵਜ੍ਹਾ ਨਾਲ ਇੱਥੇ ਕੇ ਟੁੱਟ ਕੇ ਆ ਸਾਹਮਣੇ ਨਾ ਸੌਦੇ ਵਾਲੇ ਅਲੱਗੇ ਸੌਦੇ ਵਾਲੇ ਇਹਨਾਂ ਨੂੰ ਬਹੁਤ ਉਹ ਤੋਂ ਚਾਰ ਗੁਣਾ ਕਪੀ ਦੇ ਸੌਦੇ ਆ ਉਹਦਾ ਸੈਂਟਰ ਹਰਿਆਣੇ 'ਚ ਹੈ ਉਹਨਾਂ ਦਾ ਤੋਤਾ ਜਿਹੜਾ ਹੈ ਨਾ ਜਿਸ ਪ੍ਰਾਣ ਸਾਰਿਆਂ ਦੇ ਹਰਿਆਣੇ ਹਰਿਆਲੇ ਜਾਂਦਾ ਸਾਰੇ ਦੇ ਪ੍ਰਾਣਤ ਹੋ ਗਏ ਹਰਿਆਣੇ ਦੇ ਉੱਥੇ ਗਾਂਦਰ ਦਾ ਰਾਜ ਇਹ ਤਾਂ ਸਦਾ ਹੀ ਨੇ ਇਹ ਵੀ ਨੀਤੀ ਇਹਦਾ ਨਾਸਪਾ ਉਹ ਨੀਤੀ ਚੱਲ ਅੱਗੇ ਉੱਠਣਾ ਚੱਲਾਂਗੇ ਕੀ ਹੁੰਦਾ ਚੱਲੇ ਰੂਗੇ ਇਹਦੇ ਚੱਲਾ ਹੁੰਦਾ ਬਖਰਾ ਹਾਂ ਲੋਬ ਜੀ ਵਧੀਆ ਹੈ ਮਕਰ ਹਾਂ ਜਾਓ ਇੱਕ ਹੋਰ ਮਛਲੇ ਨਾਲ ਮਕਰ ਮਛਲਾ ਮਕਰ ਮਕਰ ਤਾਂ ਫਿਰ ਉਹ ਪੀਦਾ ਰਾਸ਼ਨ ਤਾਂ ਕੱਲ ਨਾ ਕੁਝ ਨਹੀਂ ਜਾਉਂਦਾ ਕੱਲ ਨਾ ਨਹੀਂ ਕੋਈ ਜਾਂਦਾ ਖਾਣੂ ਬਦੂ ਮਨ ਕੋਟਾ ਹਾਂ ਫਾਕੇ ਵਧੀਆ ਹੀ ਲੀ ਬਦੂ ਹੂੰ ਜਿਹੜਾ ਚੀਜ ਜਿਹੜੇ ਉਹ ਸਾਰਾ ਕੁ ਸਰੀਰ ਨੂੰ ਸਰੀਰ ਤੋਂ ਜਿਹੜਾ ਕੰਮ ਲੈਣ ਨੂੰ ਲੈਣਾ ਵਿਚਲ ਲਾਭ ਮਮਾ ਪੂਰੇ ਚੱਲਦੇ ਲੱਗਿਆ ਹੋਏ ਲੈਕਟਿਵ ਲਾਭ ਬੜੇ ਹੈ ਇਹ ਬਹੁਤ ਪੁਰਾਣੀ ਸੀ ਹੈਗੇ 25-30 ਲੱਖ ਦੇ ਬਜਰਾ ਬਜਰਾ ਹੋਈ ਹੈ ਚਲ ਜਾ ਰਿਹਾ ਹੈ ਚਲ ਚਲ ਚਲ ਚਲ ਚਾਹ ਦਾ ਰੋਟੀ ਕਹਿੰਦਾ ਓਖਾ ਗੁੱਠੀ ਛੱਡਦਾ ਨਹੀਂ ਮੰਦਰ ਖਿਲਾਂ ਦੀ ਕਹਦਾ ਮੈਨੂੰ ਕੁਝੀ ਦੇ ਫੜ ਲੈ ਕੁਤੀ ਤਾਇਆ ਭੜੀਏ ਕਿ ਤੈਨੂੰ ਕੁਝੀ ਦੇ ਫੜਿਆ ਯਾਰ ਗੁੱਠੀ ਪਾਈ ਸੀ ਜਦੋਂ ਮੈਂ ਨਿਊ ਕਲੇਜ ਬੜਿਆ ਸੀ ਜਿਵੇਂ ਬੜਿਆ ਸੀ ਉਹ ਨਿਕਲਿਆ ਕਿਲਾ ਜੀ ਜਾ ਕੇ ਢੁੱਠੀ ਪਾ ਲਈ ਕਿਲਾ ਛੱਡ ਲਈ ਜਾਂਦਾ ਸੇ ਛੱਡ ਨਹੀਂ ਜਾਂਦਾ ਕਾ ਮਾਇਆ ਛੱਡਦੀ ਮਾਇਆ ਦਾ ਤੂੰ ਫੜਿਆ ਮਾਇਆ ਤੈਂ ਫੜ ਗਿਆ ਕੇ ਬਾਹਰ ਹੋਇਆ ਆ ਕੇ ਢੁੱਠੀ ਪਾ ਲਈ ਮਾਇਆ ਦੀ ਛੱਡਣਾ ਆਪਰੇ ਜਾਂਦਾ ਸੇ ਨੂੰ ਕਹਦੇ ਮਾਇਆ ਦੀ ਛੱਡਦੀ ਬਜਲਾ ਬਜਲਾ ਰੋ ਸੇ ਇਓਸ ਹਸ ਵਿੱਚ ਉਠ ਨਾਮ ਜਪ ਇਹਦਾ ਮਤਲਬ ਹੈ ਜਾਗਦਾ ਯਹੋ ਇੱਕ ਜਗੰਦੇ ਨਾਮ ਹੈ ਜਿਹੜਾ ਜਾਗਦਾ ਵੀ ਹੈ ਉਹਦਾ ਲੈਦਾ ਵੀ ਨਹੀਂ ਜਾਨਾ ਗਿਓ ਹੋ ਬਚਲ ਹੋ ਰਿਹਾ ਪੇ ਹੈ ਜਾਗਦਾ ਹੀ ਬਚਲ ਹੋਰ ਟਾਈਮ ਲੱਗ ਜਾ ਹੋਰ ਲੰਗ ਜਾ 10 ਮਿੰਟ ਰੌਣ ਤੇ ਮੈਂ ਬਗਰੂ ਚਲਾ ਜਾਵਾਂ ਪਹਿਲੇ ਤੋਂ ਹੀ ਜਦ ਤੱਕ ਨਾ ਚੜ। ਉਹ ਚੱਲ ਐ। ਮੇਰੇ ਘੜੀ ਨਹੀਂ ਆਪਣੀ ਬਿਨਾ। ਚਾਲਾ ਦੇ ਉੱਠ ਨਾਮ ਦਿਨ ਰਾਤ ਲੱਗਿਆ ਰਾ ਰਾ ਚ। ਬਾਈ। ਕੁਛ ਬਗਣਾ। ਰਾਦ ਨੂੰ। ਜਿਹੜਾ ਬਾਲਾ ਫੇਰਦਾ ਸਬਦੀ ਲਾਉਂਦਾ ਨੂੰ ਕਿ ਉਹ ਰੀਗਰ ਸੁਖਿਆ ਉਹ ਰੁਖ ਹੈ ਨਾ ਉਠਣਾ ਉਜਾਵੇ ਨਾ ਤੂੰ ਯਾਦ ਨਾਮ ਜਪਣ ਦੇ ਜਿਹੜੇ ਤੂੰ ਵੀ ਲੱਛੜ ਦੱਸਦੇ ਜਿਹੜੇ ਤਾਂ ਸੁਡੇ ਹੋਏ ਨੇ ਗੱਲਾਂ ਉਹਦੇ ਹਿਸਾਬ ਨਾਲ ਵੀ ਤੇਰਾ ਨਾਮ ਠੀਕ ਨਹੀਂ ਹੈਗਾ ਜੀ ਰਿਜ਼ਲਟ ਇਹਦਾ ਕੋਈ ਨਹੀਂ ਆ ਰਿਹਾ ਫਿਰ ਤੂੰ ਇਹ ਕਿਉਂ ਕਰੀਏ ਰਿਜ਼ਲਟ ਨਹੀਂ ਆ ਰਿਹਾ ਜੇ ਜਾਟੇ ਦੀ ਪੁੱਛ ਆ ਰਿਹਾ ਫਿਰ ਦਵਾਈ ਤੂੰ ਜਾਣ ਲਗੇ ਕੋਈ ਖਾਈ ਜਾਂਦਾ ਅਸਲ ਤੂੰ ਲੋਈ ਖਾਣੇ ਦੀ ਚਲ। ਖਾਣੇ ਜਾਂਦਾ ਹੋਵੇ ਜੇ ਤੈਨੂੰ ਇਹਦੇ ਛੱਡ ਦੇ ਕੰਮ ਸੁ। ਜੀ ਦਾ ਲਾਭਰੀ ਇਹਦੇ ਛੱਡ ਦੇ। ਇਹ ਕਿਉਂ ਕਿਰਤ ਕਰਨ ਲੱਗ ਜਾ। ਦੋ ਹੱਥਾਂ ਨਾਲ ਕੰਮ ਕਰ ਬਾੜਾ ਫੜ ਕੇ ਬਹਿ ਗਿਆ ਬਹਾਨਾ ਬਣਾ ਕੇ। ਉਹ ਕੰਮ ਕਰ। ਰਿਜ਼ਲਟ ਆਉਂਦਾ ਉਹ ਕੰਮ ਕਰੇਗਾ। ਹੱਥਾਂ ਨੂੰ ਰਿਜ਼ਲਟ ਤਾਂ ਪੁਛਾਉਗਾ। अपना पेट पालेगा पेट पाल के किसी नु कुछ दे देगा कब उसका कर्जादाता किसे कर रहने हुगा किसे दा काल <ुण्य>। खाए के छथों जेडी अर्थ करते हो उसका बाहर ले ही सही अर्थ इने दा सच दा होऊंगा ही काल खाए के छथों संसार लोग दा तथ्य ही है दा नरा पहचाने से छह तेनु फिर आदी पहचान लाजे तेनु राहियो पछोड़ी ਦੋ ਵੇ ਪਤਾ ਲਿਖੀ ਪਿੱਛੋਂ ਸ਼ੁਰੂ ਕਰ ਜਾਈਂ ਕਾਲੇ ਗੱਲੀ ਤੇ ਵੀ ਮੈਨੂੰ ਪਤਾ ਲੱਗਿਆ ਤੈਨੂੰ ਇਹ ਪਤਾ ਹੀ ਲੱਗੇ ਕਿ ਜੋ ਦੋ ਨਾਮ ਜਪ ਰਹੇ ਉਹ ਨਾਮ ਭੇਗਰੀ ਹੈ ਤੁਹਾਨੂੰ ਪਤਾ ਹੀ ਨਹੀਂ ਨਾਮ ਕੀ ਪਹਿਲਾ ਨਾਮ ਦਾ ਪਤਾ ਤਾਂ ਲੱਗ ਗਿਆ ਜਿੰਨਾ ਚਿਰ ਨਾਮ ਦਾ ਪਤਾ ਨਹੀਂ ਹੈਗਾ ਉਹਨਾਂ ਚਿਰ ਕਰਤਕਾਰ ਤਦਾਂ ਨਾਮ ਦੇ ਕਰਤਕਾਰ ਉਹਦੇ ਜੋ ਵੀ ਹੋ ਸਕਦਾ ਕਰ ਜਦੇ ਤੱਕ ਕਰੇ ਥੱਲੇ ਵਾਲਾ ਪੋਰਥ ਕਰ ਲੈ ਥੱਲੇ ਵਾਲਾ ਪੋਰਥ ਨਹੀਂ ਕਰੀਤਾ ਠੀਕ ਚਾਲਾਂਗੇ ਉੱਠ ਨਾ ਜਪ ਦਿਸ ਵਾਸਰ ਆਰਾਧ ਪਹਿਲਾਂ ਨਾਮ ਜਪ ਪਹਿਲਾਂ ਰੋਗ ਜਪ ਫਿਰ ਆਰਾਧ ਨਦੀ ਲੋੜ ਹੈ ਮਾਰਾ ਗਰਦੀ ਨਾਮ ਨੂੰ ਪਹਿਲਾਂ ਸਮਝ ਲੈ ਨਾਮ ਨੂੰ ਜਾਣ ਲੈ ਕੀ ਹੁੰਦਾ ਨਾ ਬਲੋ ਆਰਾਮ ਕਾ ਰੂੜੇ ਫਿਰ ਪਾਛੇ ਨਾਵ ਜਾਣਿਆ ਨਹੀਂ ਵੈਸ ਰੁਪਏ ਨੂੰ ਕਰੀ ਜਾਂਦੇ ਕੋਈ ਰਿਜ਼ਲਟ ਹੀ ਹੋਵੇ ਤਾਂ ਆਇਆ ਜੂ ਹਵੇ ਪਤਾ ਨਾ ਪੁੱਛੋ ਪਤਾ ਲੈ ਨਹੀਂ ਬੰਦਾ ਤਾਂ ਪੁੱਛੋ ਪਤਾ ਉਸ ਵੇਲੇ ਵੀ ਇਹ ਜਾਂਦੀ ਸੀ ਫੁਰ ਵੀ ਉਹੀ ਜਾਂਦੀ ਬਦਲੇ ਢਿਆੜ ਜਾਂ ਤੂੰ ਕਹੇ ਬਦਲੇ ਕੋਈ ਨਹੀਂ ਹੈ ਇਹ ਤਾਂ ਪਾਣੀ ਹੋ ਜਾਂਦਾ دریا ਚ ਕਹੀਂ ਖੜੀ ਹੁੰਦੀ ਹੈ ਪਾਣੀ ਰੰਗਿਆ ਤਾਂ ਕਹੀਂ ਫੇਸਦੀ ਹੋ ਜਾਂਦਾ ਅਹੀਂ ਦਿਨੇ ਰਖੜੀ ਵੀ ਪੈ ਗਿਆ ਪਾਣੀ ਆਇਆ ਪਾਣੀ ਰੁਕ ਗਿਆ ਕਾਹੀ ਮਿਹਰਤ ਦੀ ਘੜੀ ਹੋ ਗਈ ਗੁਰੂ ਘਰ ਤਾਂ ਇੰਨਾ ਕਹੇ ਪਾਣੀ ਆਇਆ ਦੋ ਚਾਰ ਦਿਨ ਪਾਣੀ ਡੋਢ ਗਿਆ ਕਲੀ ਮਿਹਰਤ ਹੋ ਗਈ ਜਿਹੜੀ ਪੁੱਟੀ ਗਈ ਕਹੇ ਜੋ ਪੁੱਟੀ ਨੂੰ ਜਿਹੜੇ ਜਣਾ ਆਪਣੀਆਂ ਗੁਰੂ ਨੂੰ ਅਰਪਣ ਕਰਦੀ ਹੁ ਪੁੱਟੀ ਦੇ ਘਟਵੋਗੀ ਜਿਹੜੀ ਤੇ ਝੋਗੀ ਸੀ ਉੱਤੇ ਦੀ ਰਹਿੰਦੀ ਆ ਪਾਣੀ ਫੇਖੜੀ ਹੋਈ ਇਹ ਜੈ ਸੰਸਾਰ ਹੈ ਦਾ ਹਾਂ ਜਿਸ ਵਾਸਤਰਾ ਆਰਾਧ ਫਿਰ ਆਰਾਧਨਾ ਹੋਊਗੀ ਤੇਰੀ ਜਿਸ ਵਾਸਤ ਚੇਤੂ ਦਾਬ ਨੂੰ ਸਮਝ ਲਵੇ ਉਤੇ ਬਾਦ ਆਰਾਧਨਾ ਨਹੀਂ ਲੱਗਦੀ ਸਾਚੇ ਨਾਮ ਕੀ ਲੱਗਦੀ ਜਦ ਭੁੱਖ ਲੱਗਿਆ ਹੁੰਦੀ ਹੈ ਫਿਰ ਇਹ ਹੈ ਨਾਨਕ ਮੰਗੇ ਨਾਮ ਦਾਲ ਕਿਰਪਾ ਇਹੀ ਦੋਏ ਕਰ ਜੋੜ ਕਰੂ ਅਰਦਾਸ ਪਰਾਧਨਾ ਦੇ ਵਿੱਚ ਦੋ ਕਰ ਜੋੜ ਕਰੂ ਅਰਦਾਸ ਬਸ ਮਨਾਂ ਕਿ ਤੁਸੀਂ ਜੋੜਾ ਹੱਥ ਪਰਾਂ ਨੂੰ ਜੋ ਮਂਦੀ ਕਰਾਏ ਇਹ ਰੂਹ ਰਾਦਰ ਕੇਂਦਰ ਪਹਿਲਾਂ ਜਪੜ ਜਿਹੜਾ ਸੇਵਲ ਦੇ ਜਾਗਣਾ ਜਪਣ ਦੇ ਨਾਲ ਜਾਗਣਾ ਜਾਗਣਾ ਦੇ ਨਾਲ ਜਪਣ ਨੂੰ ਨਾਲ ਦੀ ਨਾਲੇ ਜਦੋਂ ਜਪਨੇ ਹੋਵੇ ਇਹਨਾਂ ਜਪ ਹੈ ਉਹ ਨਹੀਂ ਸਮਝਾਂਗੇ ਜਿਹਨਾਂ ਜਪ ਨਹੀਂ ਸਮਝਾਂਗੇ ਇਹਨਾਂ ਜਪ ਨਹੀਂ ਸਮਝਾਂਗੇ ਸਿਮਰਨ ਜਪੜ ਦਾ ਨਾਮ ਵਾਲੇ ਪਰ ਜਪਣੋਂ ਤੋਂ ਪਹਿਲਾਂ ਸਿਮਰਤ ਬਾਚ ਗੁਰਬਾਣੀ ਦੇ ਉੱਤੇ ਸਿਮਰਨ ਪਹਿਲਾਂ ਲਿਖਿਆ ਜਾਂਦਾ ਜਪ ਨਹੀਂ ਸੀ ਲਿਖਣਾ ਜੇ ਜਪ ਪਹਿਲਾਂ ਨਾ ਹੁੰਦਾ ਸਿਮਰਨ ਲਿਖਣਾ ਉਹ ਤੇ ਸਿਮਰਨ ਨੇ ਜਿੱਥੇ ਜਪ ਲਿਖਿਆ ਹੋਇਆ ਹੈ ਉੱਥੇ ਸਿਮਰਨ ਚਾਹੀਦਾ ਸੀ ਲਿਖੋਣਾ ਜੇ ਜ਼ਰੂਰਤੀ ਪਹਿਲਾ ਹੁੰਦੀ ਗੱਲ ਸਭ ਤੋਂ ਪਹਿਲਾਂ ਜਾਪਾ ਤਾਂ ਜਾਬ ਲੈ ਕੇ ਪਹਿਲਾਂ ਜਪ ਮੰਨ ਸਦਾ ਸਤਿਰਾ ਉਹ ਸਤ ਜਪ ਜਿਹੜਾ ਸਦਾ ਸਤਰਾ ਜਪ ਮੰਨ ਭੇਰੇ ਗੋਬਿੰਦ ਕੀ ਦੇ ਨਾਲ ਜਾਗਣਾ ਜਾਗੜੇ ਸੋੜ ਜੋ ਜੋ ਜਾਗਦਾ ਆ ਪਰ ਤੂੰ ਸੌ ਜਾਂਦੇ ਓ ਸਭ ਕੁਝ ਭੁੱਲ ਜਾਂਦੇ ਓ ਉੱਠਦੇ ਆ ਸਾਰਾ ਇਸ ਵਰਲਡ ਹੋ ਜਾਂਦਾ ਪਿਆਰ ਪੁਰਾਣੇ ਤੋਂ ਕੰਮ ਕਰਨਾ ਸੀ ਲੇਟ ਹੋ ਗਏ ਸਾਰਾ ਸਵਰਡ ਕੇ ਮੈਂ ਨਾਲ ਜਾਗਦਾ ਹੈ ਜਾਗ ਰੋ ਸਵਰਡ ਕਿਾ ਕਵੇ ਚੇਤਨਾ ਸਿਵਲ ਕੋਈ ਗੱਲ ਹੈ ਚੇਤਾ ਆ ਗਿਆ ਸਿਵਲ ਹੋ ਗਿਆ ਚੇਤਾ ਆ ਗਿਆ ਤੇ ਸਿਵਲ ਹੋ ਗਿਆ ਕੋਈ ਗੱਲ ਨਹੀਂ ਚਾ ਚਲੋ ਜਾਗਣਾ ਹੁੰਦਾ ਜਾੜ ਕੇ ਤੇ ਜਗ ਮੇਂ ਰਹਿ ਸੁਆ ਜਗ ਮੇਂ ਕੌਣ ਸੁਆ ਅਜੀਬ ਸੁਆ ਰਿਹਾ ਜਿਹੜਾ ਤੱਜ ਬੰਦ ਸੁਆ ਰਿਹਾ ਤਾਂ ਇਹ ਸੁਆ ਰਿਹਾ ਸੋਝਾ ਜਿ ਕੋਣ ਸੁਆ ਰਿਹਾ ਪਰ ਬੇਸਨ ਇੱਥੇ ਗਲਤੀ ਕਰਦੇ ਹੋ। ਚੇਤੇ ਉਹ ਹੈ ਜਿਹੜਾ ਸਰੀਰ 'ਚ ਸਮਾਇਆ ਹੋਇਆ ਜਿਹਦੇ ਉਹ ਜਾਣ ਲਿਆ। ਜਦ ਕਦੇ ਚੇਤੇ ਉਹ ਜਾਣ ਕੇ। ਜਾਗ ਵਿੱਚ ਉਹ ਚੇਤੇ ਸਰੀਰ ਦੇ ਵਿੱਚ। ਜਦਦਾ ਹੁੰਦਾ ਸਰੀਰ ਦੇ ਵਿੱਚ ਉਹ ਜਾਗਿਆ। ਚੇਤੇ ਕਿ ਜਾਣ ਕੇ ਤੇ ਜਾਗ ਬਿਰਾਹਾ ਸਵਾ ਸਰੀਰ 'ਚ ਜੋ ਸਮਾਇਆ ਹੈ ਜੋ ਯਾਤ ਵਿੱਚ ਜੋਤ ਨੂੰ ਜਾਣ ਕੇ ਹੀ ਜਾਗਿਆ ਕੋਈ ਓਹ ਓਹ ਤੂੰ ਕਿੱਥੇ ਸਰੀਰ ਨਹੀਂ ਇਹ ਕੀ ਹੈ ਇਹ ਬਿਰਤਕ ਹੈ ਬਿਲਕੁਲ ਜਾਗਿਆ ਲਈ ਫਿਰ ਬਿਰਤਕ ਹੈ ਆਪਣੇ ਆਪ ਨੂੰ ਸੇਖਣ ਦਾ ਫਿਰ ਬਿਰਤਕ ਬਿਰਤਕੋ ਜੀਵਾਲਣ ਹਾਂ ਸਰੀਰ ਨੂੰ ਜਿਹੜਾ ਮੈਂ ਜਦਾ ਕਰਦਾ ਬਿੱਤੇ ਕਰਨਾ ਹੈ ਰਤਕੋ ਆਤਮਾ ਨਾਲ ਹੋਏ ਜਿਹੜੀ ਆਪਣੇ ਆਪ ਨੂੰ ਸਰੀਰ ਬੰਦੀ ਜੀਵਾਲਣ ਜੀਵਣ ਵੀ ਹੋਣੀ ਹੈ ਕਿ ਜੀਵ ਉਸੇ ਨੇ ਹੋਣਾ ਜੋ ਮਰਦਾ ਉਸੇ ਦੇ ਜੀਵਦਾ ਹੁੰਦਾ ਜੀਵ ਜਿਹੜਾ ਹੈ ਨਾ ਇਹ ਜੀਵ ਜਾਦਾ ਹੈ ਜਾਦਾ ਹੈ ਸਰੀਰ ਤੋਂ ਵੱਖਰਾ ਹੈ ਫਿਰ ਜੀਵ ਹੈ ਜੇ ਸਰੀਰ ਲੁਕ ਗਿਆ ਆਪਣੇ ਆਪ ਨੂੰ ਸਰੀਰ है ਹੈ ਫੇਰੇ ਬਿਰਤਕ ਹੈ ਇਹ ਪਿੰਡਾ ਤਾਂ ਬਿਰਤਕ ਹੈ ਆਹ ਜੇ ਪਿੰਡਾ ਤਾਂ ਬਿਰਤਕ ਹੈ ਜੇ ਕਹਦਾ ਮੈਂ ਖੜਾ ਤੇਰੇ ਸਾਹਮਣੇ ਫੇਰੇ ਬਿਰਤਕ ਹੈ ਫੇਰ ਇਹਦੇ ਵਾਸਤੇ ਬਿਰਤਕ ਲਾਹਜਾਊਗਾ ਸੋ ਜੀਵੇ ਸੋ ਜੀਵਤ ਜਿੰਨ ਜੀਵਤ ਜਪਿਆ ਜੀਵਤ ਜਪਿਆ ਸੋ ਜੀਵਤ ਜੇ ਜੀਵਤ ਜਪਿਆ ਜੈ ਜੀਵਤ ਜਪਿਆ ਜੇ ਜੀਵਤ ਜੇ ਜਪਿਆ ਨਹੀਂ नहीं ਕੀ ਹੈ ਜੀਵਤ ਨਹੀਂ ਹੈ ਫਿਰ ਅਜਿਨੇ ਆਪਣੇ ਆਪ ਨੂੰ ਨਹੀਂ ਜੋਤ ਸਮਝਿਆ ਉਹ ਵੀ ਸਮਝ ਨਹੀਂ ਕਰਦਾ ਐਕਸਲਰੀ ਜਿਹੜੀ ਬਲੂ ਹੈ ਪਰ ਉੱਥੇ ਜੀਵ ਸੋਚੀ ਜਾਂ ਬਿਰਤਕ ਪੁੱਛੀ ਇਹ ਕਹ ਰਹੀ ਹੈ ਯਾਨੀ ਜਿਹਨੂੰ ਪੱਥਰ ਕਹ ਹੈ ਪੱਥਰ ਬੁਗਦ ਜੀਵਤ ਨਹੀਂ ਜੀਵਤ ਹੁੰਦਾ ਹੈ ਵੀ ਜੀਵਤ ਨਹੀਂ ਸਾਦਾ ਜਾਂਦਾ ਹੈ ਮਰਦਾ ਵੀ ਨਹੀਂ ਹੈ ਫਿਰ ਮਰਦਾ ਵੀ ਪਰ ਜੀਵਤ ਕਿਉਂ ਨਹੀਂ ਸਵਾਲ ਖੜਾ ਹੋਊਗਾ ਅਗਲਾ ਸਵਾਲ ਹੈ ਮਰਦਾ ਵੀ ਨਹੀਂ ਹੈ ਫਿਰ ਇਹਨੂੰ ਜੀਵਤ ਬਰਤਕ ਕਿਵੇਂ ਕਰਦਾ ਮਰਦਾ ਵੀ ਨਹੀਂ ਫਿਰ ਇਹਨੂੰ ਬਰਤਕ ਵਰਤਕ ਦਾ ਬਦਲ ਹੁੰਦਾ ਮਰਨ ਵਾਲਾ ਜੋ ਮਰ ਸਕਦਾ ਹੈ ਅੱਛਾ ਜਿਤਕ ਜਿਹਦੀ ਮਰਨ ਦੀ ਸੰਭਾਵਨਾ ਹੈ ਉਹ ਸੋਵੜ ਜਾਗਣ ਬਹੁਤ ਪ੍ਰਕਾਰ ਜਿਹੜਾ ਮਰਨਾ ਹੈ ਇਹ ਵੀ ਕਈ ਪ੍ਰਕਾਰ ਐਸੀ ਬਰਦੀ ਜੋ ਬਰਦੀ ਬੜੀ ਵੀ ਕਪਰਕਾਰ ਦੀ ਜੀ ਤੇ ਆ ਕਿਹਾ ਜਾਣਾ ਕਿਵੇਂ ਮਰਨਾ ਚਾਹੀਦਾ ਐਸਾ ਮਰਨਾ ਹੋਵੇ ਇੱਕ ਪ੍ਰਕਾਰ ਦਾ ਹੀ ਹੈ ਸਾਡੇ ਕੋਲ ਕੋ ਇੱਕੋ ਉਹਨਾਂ ਨੇ ਇੱਕ ਪ੍ਰਕਾਰ ਦਾ ਮਰਨਾ ਦੂਈ ਪ੍ਰਕਾਰ ਦਾ ਮਰਨੇ ਦਾ ਉਹਨੂੰ ਪਤਾ ਹੀ ਦੇ ਇੱਕ ਕਿਵੇਂ ਤੁਸੀਂ ਅਮਾ ਵੀ ਅਸ ਗਾਲ ਨੂੰ ਦੇਖੋ ਕਿ ਮੈਂ ਪੰਗਾ ਲੈ ਲਿਆ ਉਹਨੇ ਇਹਦੇ ਵਿੱਚ ਫੁੱਟ ਜੱਤ ਪਾ ਲਿਆ ਗਾਹਾਂ ਹੱਥ ਖੋਲੇ ਉਹਨੂੰ ਕੱਪਾ ਕੱਪਾ ਅਜਿਹਾ ਦੇ ਤੇ ਬੜੀਆਂ ਤਾਂ ਸਾਡੇ ਕੋਲ ਇੱਕ ਪ੍ਰਕਾਰ ਦਾ ਕੋੜੇ ਦੇ ਸੋਪਣ ਜਾਗਣ ਦੋ ਪ੍ਰਕਾਰ ਦਾ ਨਹੀਂ ਬਹੁ ਪ੍ਰਕਾਰਾਂ ਦਾ ਬਹੁ ਪ੍ਰਕਾਰਾਂ ਦਾ ਨਹੀਂ ਬਹੁ ਉਹ ਦੱਸਣਗੇ ਜਿਹੜਾ ਇਹ ਦੱਸੂਗਾ ਉਹ ਦੱਸੂਗਾ ਸਿਹਤਨ ਗੱਲਾਂ ਦਾ ਜਵਾਬ ਦਊਗਾ ਦੱਸੂਗਾ ਕੀ ਪੰਜਾ ਦੇ ਅੱਲਾ ਨੇ ਇਹ ਇਹ ਆਪੇ ਚੁੱਪ ਕਰ ਲੈਣਗੇ ਦੋ ਜੁੱਤੀਆਂ ਪਈਆਂ ਤੇ ਇਹਦੇ ਕੋਲ ਹੈ ਕੀ ਦੱਸੋ ਆਹ ਚੀਜ਼ਾਂ ਦਾ ਜਵਾਬ ਦੇ ਦਿਓ ਫਿਰ ਅਸੀਂ ਮੰਨ ਲਾਂਗੇ ਬਾਅਦ ਗੱਲ ਕਰਾਂ ਪਹਿਲਾਂ ਜਵਾਬ ਦੇ ਕਾਰਾ ਤੁਝੇ ਨਾ ਵਿਆਪੀ ਕਾਰਾ ਕੀ ਹੁੰਦਾ ਕਾਲੇ ਨੂੰ ਕਾਰਾ ਕਹਿੰਦੇ ਕਾਰਾ ਕਰਨੀ ਲੋਦਰੀ ਕਾਰਾ ਹੋ ਗਿਆ ਬਸ ਸੁਣ ਕਾਰੋ ਆਹ ਬਸਨ ਕਾਰੋ ਬਸਨ ਕਾਰੋ ਪਰ ਸੀਗਾ ਕਾਲੋ ਨਹੀਂ ਹੈਗਾ ਮੇਰਾ ਨਹੀਂ ਹੈ ਬਸਨ ਪਰ ਫਸ ਗਿਆ ਤੋ ਕੁਛ ਲੱਗਦਾ ਹੈ ਕੋਈ ਤੇ ਯਾ ਵੀਰ ਬੋਲੀ ਕਰੀ ਹੈ ਯਾ ਵੀਰ ਬੈਠਾ ਈ ਹੈ ਅਗਿਆਲਾ ਦਾ ਮਤਲਬ ਪਰ ਪਰ ਨਿੜੇ ਨਿੜੇ ਹਰ ਉਹਦੀ ਤੁਹਾਡੇ ਉਧਰ ਕਹਿੰਦੇ ਹਮ ਗਿਆਨ ਤਾਂ ਵੱਧਦੀ ਫਿਰ ਗਿਆਨ ਤਾਂ ਵੱਧਦੀ ਪਰਮਤ ਆ ਗੁਰੂ ਦੀ ਦੇਹ ਸੂਰਜੇ ਪੜਦਾ ਤੇਰਾ ਥੋੜਾ ਹੁੰਦਾ ਗਾਲਾ ਹੀ ਕਾਲਾ ਹੀ ਹੋ ਨਾ ਤੇਰੇ ਅੰਦਰ ਤੇਰਾ ਕਾਲਾ ਪੜ ਨਹੀਂ ਬਦੂਗਾ ਕਾਲਾ ਪਣ ਬਦਦਾ ਨਹੀਂ ਜਦੋਂ ਬਜੁਰੂ ਕੀ ਮੂੰਹ ਕੋ ਮੱਲ ਲਾ ਕੇ ਕਾਲਾ ਹੋਇਆ ਜਿਹੜਾ ਇਹ ਜਨਮ ਵਿੱਚ ਕਾਲਾ ਹੋਣਾ ਸੀ ਉਹ ਬੱਜੂਗਾ ਉੱਥੇ ਤੇ ਸਿਆਗਾਲਾ ਤਾਂ ਹੋਇਆ ਹੋਇਆ ਫਿਰ ਜ਼ਿਆਦਾ ਨਹੀਂ ਹੁੰਦਾ ਜਿੱਦਾਂ ਵੀ ਹੋਇਆ ਹੋਇਆ ਹੋਇਆ ਜਿੰਨਾ ਹੈਗਾ ਉਹ ਤਾਂ ਹੈਗਾ ਪਰ ਕਾਲਸੋੜ ਬਦੂ ਨਹੀਂ ਹੂੰ ਕਿਉਂ ਕਾਲੇ ਤੇ ਨੱਦਗਾ ਬਦਦਗਾ ਤਾਂ ਫਾਈ ਕਾਲੇ ਹੋਈ ਜਾਂਦੇ ਹੋਈ ਜਾਂਦੇ ਵਸ ਹੂੰ ਨਾਨਕ ਮਿਟਾਇ ਉਪਾਉ ਦੀ ਉਪਾਉ ਦੀ ਮਿਟੂਗੀ ਉਪਾਉ ਦੀ ਕੀ ਹੈ ਉਪਾਉ ਦੀ ਹੁੰਦੀ ਹੈ ਜਿਹੜਾ ਕੋਈ ਸ਼ਰਤ ਕਰਦਾ ਸੱਟ ਲੱਗੀ ਹੋਈ ਹੋਵੇ ਉਹਨੂੰ ਦਾ ਹੈ ਭੱਜਣਾ ਕਿ ਸ਼ਰਤ ਲੇਕਰ ਆਏ ਫੇਰ ਲੱਜਦੀ ਕਰਦਾ ਸ਼ਰਤ ਉਹਦਾ ਦੀਲੀ ਹੂੰ ਗਿਆ ਹੋਈ ਆਪੇ ਉਹ ਰਾਜਾ ਦਾ ਵਿਆਹ ਹੋ ਗਈ ਵਿਆਹ ਦਾ ਆਪੇ ਕੇ ਦੋ ਟੋਟੇ ਨੇ ਦੋ ਹੋਰ ਹੋ ਜਾਣ ਉਹ ਬਾਦ ਦੇ ਬਾਦ ਦਾ ਵਿਆਹ ਹੋ ਗਿਆ ਬੈ ਜੂਰਾ ਹੀ ਜਿਆਦਾ ਸੱਟ ਲੱਗੇ ਕਿਸਾਨੇ ਹੁੰਦਾ ਉਹ ਜਿਹੜਾ ਪਹਿਲਾ ਸੱਟ ਤਾਂ ਹੈ ਰੋ ਵਿੱਚ ਖੜਾ ਕਰੀਏ ਵਿਆਹ ਦੇ ਵੱਟਾ ਹੋ ਜਾਂਦਾ ਨਾ ਦੇਖੋ ਇਹ ਭਾਈ ਦੁਆਰਾ ਠੀਕ ਹੋਣੀ ਵੀਰੇ ਹਾਂ ਨਾਲ ਉਪਾਦ ਦੇ ਨੂੰ ਕਹਿੰਦੇ ਆਦ ਪਿਆਰ ਤੇ ਉਪਾਦ ਸਿਰਲੇਖ ਆਦ ਜਿਹੜੀ ਹੈਗੀ ਹੈ ਉਹ ਤਾਂ ਹੈ ਉਹ ਪਰ ਬੁਲੇ ਕੇ ਆਇਓ ਤਾਂ ਹੈ ਉਹ ਹਾਂਜੀ ਉਹ ਤਾਂ ਹੈ ਪਰ ਵਿਆਹ ਕਦੋਂ ਹੁੰਦੀ ਹੈ ਵਿਆਹ ਨੂੰ ਕਰਕੇ ਹੁੰਦੀ ਉਪਾਦੀ ਰਗ ਨੂੰ ਪਾਤੀ ਕੀ ਹੈ ਜਿਹੜਾ ਚੱਲਦਾ ਹੈ ਵਿਚਵਾਂ ਬਤਾਉਂਦਾ ਵੀ ਵੇ ਰੋਕਦੇ ਜਿਹੜਾ ਚੱਲਦੇ ਆ ਹੋਰ ਕੰਮ ਛੱਡ ਜੂ ਹੋਰ ਕੋਈ ਯੂਟਿਊਬਰ ਉਹ ਬੈਠੀ ਹੈ ਉਹ ਬੈਠੀ ਅੱਗੇ ਤਾਂ ਇੱਕ ਜੋੜਾ ਆ ਹੈ ਸੇਹਾ ਤੇ ਥੇਵ ਇਹ ਤਾਂ ਵੀ ਮੋੜ ਲੱਗ ਹੀ ਹੋਇਆ ਤੋ ਜਿਹੜੀ ਆੜੀ ਸੁੱਦੀ ਐ ਵੀ ਛੁੱਟ ਕੰਮ ਕਰਦਾ ਹੈ ਤੇ ਰੋਕਦਾ ਕੁਦਰਤ ਨੂੰ ਚੱਲਦੀ ਨੂੰ ਪੀੜਣ ਦਾ ਮਤਲਬ ਹੈ ਕੁਦਰਤ ਨੂੰ ਹੱਥ ਲਾਣ ਰੋਕਦਾ ਇਹਨੂੰ ਪਿਛੇ ਮੁੜ ਜਾ ਕੇ ਪਿਛੇ ਨੂੰ ਰੋਕ ਲੈ ਫਾਟਾ ਕਰਿਆਲੇ ਹੁੰਦੇ ਨੇ ਉਹ ਕਹਿੰਦਾ ਮੈਂ ਉੱਤੇ ਹੀ ਰੋਕ ਦੂੰ ਸਕਾਇਲਰ ਆਉਂਦੇ ਨੇ ਕਰ ਉਹ ਐ ਇਹ ਕਰਦਾ ਉਹ ਕਿਵੇਂ ਰੱਖ ਜੂ ਉਹ ਦੀ ਰੱਖਦਾ ਇੱਕੋ ਦਾਤ ਦਿੱਲਕ ਦੀ ਕਲਪਨਾਵਾਦੀ ਹੈ ਕਲਪਨਾਵਾਦੀ ਹੈ ਇਹ ਜਿਹੜੇ ਲੋਕ ਬੇਗਾਨ ਬਸ ਸਾਰੀ ਉਹ ਬੱਦੀ ਕਲਪਨਾ ਅੰਦਰੋਂ ਸ਼ਰਾਰਤ ਉੱਠਦੀ ਹੈ ਅੰਦਰੋਂ ਸ਼ਰਾਰਤ ਉੱਠਦੀ ਹੈ ਅੰਦਰੋਂ ਸ਼ਰਾਰਤ ਜਿਵੇਂ ਨਿਆਣੇ ਦੇ ਉੱਠਦੀ ਹੈ ਉਹ ਸ਼ਰਾਰਤ ਤਾਂ ਉੱਠਦੀ ਹੈ ਅੰਦਰੋਂ ਉਹ ਤਾਂ ਅੰਦਰੋਂ ਹੀ ਉੱਠਦੀ ਹੁੰਦੀ ਹੈ ਨਿਆਣੇ ਦੇ ਹੋਰ ਕਿਥੋਂ ਉੱਠਦੀ ਹੈ ਸ਼ਰਾਰਤ ਅਮਗਨ ਬੁਲਾਈ ਚਾਰਤੀ ਹੈ ਜਦੋਂ ਜੁਰੀ ਪੈਦਾ ਹੁੰਦੀ ਹੈ ਕ੍ਰਿਸ਼ਨ ਦਾ ਤੀਰ ਰਹਿਣ ਘਟ तीर अंदर ਤ੍ਰਿਸ਼ਨ ਦਾ ਤੀਰ ਅਤਰੇ ਹੀ ਇਹ ਵੀ ਹਿਰਦੇ ਚੋੜਦੀ ਹੈ ਦੇਖੋ ਕਿੰਨੀ ਜਲ ਲਾ ਗਈ ਤ੍ਰਿਸ਼ਨ ਜਿਹੜੀ ਮਨ ਦੇ ਵਿੱਚ ਪੈਦਾ ਹੁੰਦੀ ਹੈ ਚਿੱਤ ਔਰ ਮਨ ਚਿੱਤ ਹੰਸ ਹੈ ਹੰਸ ਜੇ ਚਿੱਤ ਦੇ ਮਨ 'ਚ ਥੋੜੀ ਉਹਦੀ ਕਾਲਸ ਹੈ ਹੂੰ ਉਹਦੇ ਕਰਕੇ ਨਹੀਂ ਜਾਣ ਬੜਾ ਬਖਰਾ ਰਿਆ ਮਨ ਹੈ ਉਹਨੂੰ ਪਚੰਦਰਵਾਜ ਹੁੰਦੀ ਆ ਜਿੰਨੇ ਵੀ ਗਾਲ ਤੋਂ ਉਹਨਾਂ ਦੇ ਮਾਨ ਆਹੋ ਜੀ ਉਹ ਇਹ ਰੂਗਾਇ ਲੱਗੀ ਹੋਈ ਉਹਦੀ ਗਿਆਨਤਾ ਦੇ ਦੋਲੀ ਦੇਕੇ ਚਿੱਤ ਦਾ ਜਾਂ ਬੁੱਧੀ ਦਾ ਜੋ ਮਤ ਜਿੱਦਾਂ ਕੋ ਜਾ ਗਿਆਨਤਾ ਦਾ ਕਾਲਸ ਹੈ ਉੱਥੋਂ ਬਾਤੀ ਪੈ ਜਾਂਦੀ ਉੱਥੇ ਤੇ ਜਿਸ ਨਾਲ ਉੱਥੋਂ ਨਿਕਲਦੀ ਆ ਉਹ ਗਿਆਨਤਾ ਜੋ ਦਿਕਰਦਾ ਜੋ ਪਰ ਕਰਦਾ ਜਿੱਥੇ ਆਂਗਾ ਨਾ ਉੰਨੀ ਕਿ ਧਰੁਕਦੀ ਹੈ ਉੱਥੋਂ ਹੀ ਸੁਲਗਦੀ ਹੈ ਜਿੱਥੇ ਉੱਥੋਂ ਹੀ ਪੈਦਾ ਹੁੰਦਾ ਹੈ ਕੁਝ ਨਹੀਂ ਇਕਲੀ ਜਖਮ ਹੈ ਉਹ ਜਖਮ ਆ ਲੱਕੜ ਉੱਥੇ ਪੈਂਦੀ ਹੈ ਜਿੱਥੇ ਇਹ ਤਾਂ ਟੇਪ ਹੈ। ਹਨਾ ਅਜ ਵੀ ਉੱਥੇ ਹੀ ਹੁੰਦਾ। ਇਲਾਜ ਵੀ ਉੱਥੇ ਹੀ। ਇਲਾਜ ਵੀ ਉੱਥੇ ਹੀ ਦਾ ਹੀ ਹੈ। ਪੜੀ। ਹੋੜੀ। ਤੇ ਜਾ ਅਸਲ ਵਿੱਚ ਝੂੜ ਵੀ ਇਸ ਕਰਕੇ ਹੈ। ਝੂੜ ਦਾ ਕਈ ਪ੍ਰਕਾਰ ਦਾ ਹੋ ਸਕਦਾ। ਕੋਈ ਆਪਣੇ ਪੂਰੇ ਰਗੜ ਜਲਦਾ। ਸੁੱਤ ਦੀ ਜ਼ਿਆਦਾ ਜਿਤ ਹੁੰਦੀ ਹੈ। ਉਹ ਵੀ ਚੋਰਾ ਲੱਗ ਜਾਂਦਾ ਉਹ ਵੀ ਚੋਰਾ ਲੱਗ ਜਾਂਦਾ ਸਤਾਵਾ ਨਾ ਚੋਰਾ ਹੁੰਦਾ ਜ਼ਰੂਰ ਕਿੰਤਾ ਦੀ ਸੰਸਾਰ ਜਲਸੀ ਮਾ ਮਰਵਾਣੀ ਬਈਆ ਕਿਉਂ ਮਿਲਿਆ ਜੁੜਦੇ ਰਹਿਣਾ ਚੂਰਨ ਹੈ ਕਿ ਕੁਦਰਤ ਕੋਈ ਆ ਚੀਜ਼ ਐ ਹੋਈ ਨਹੀਂ ਚੋਰਾ ਲੱਗਿਆ ਮੁੰਡਾ ਹੋ ਗਿਆ ਮੇਰੇ ਹਾਉ ਇਹ ਬੁੱਢਾ ਟ੍ਰੈਕ ਲੱਗਣ ਗਿਆ ਆ ਕੁਝ ਹੋ ਗਿਆ ਉਹ ਵਿੱਚ ਸਾਰੀ ਜੀਜਾ ਕੁਝ ਵੀ ਇਹ ਨੁਕਸਾਨ ਹੋ ਗਿਆ ਕਿਸੇ ਵੀ ਪ੍ਰਕਾਰ ਦਾ ਕੋਈ ਗੱਲ ਕਰੀਆ ਇਹਦਾ ਕੰਮ ਹੱਕਦਾਰ ਸੀ ਤੂੰ ਇਹਦਾ ਹੱਕਦਾਰ ਕਿਉਂ ਸੀਗਾ ਕਿਤੇ ਇਹਦੇ ਫੈਕਟ ਬੁਝਾਏ ਆਪਣਾ ਬੰਧਨ ਕਰਦੇ ਵੀ ਮੈਨੂੰ ਘਟ ਕਿਉਂ ਗਿਆ ਵੀਰੇ ਚ ਕੀ ਇਫੈਕਟ ਹੈ ਇਹਦੇ ਚ ਕੀ ਗੋਲ ਸੀ ਦੇੜਾ ਲੈ ਲੁਗਾ ਲੈ ਤਾਂ ਬਦੂ ਘਟ ਤੇਰੇ ਚ ਕੋਈ ਕਮੀ ਹੈ ਮੈਂ ਉਹ ਕਮੀ ਨੂੰ ਔਰ ਕਰ ਕਿਹਾਦਾ ਹੈ ਜੇ ਕੋਈ ਕਮੀ ਹੈ ਮੈਂ ਕਮੀ ਦੂਰ ਕਰਾਂ ਜਾਂ ਫਿਰ ਇਹ ਤਾਂ ਸਕਦਾ ਵੀਰੇ ਤੇ ਖੁਸ਼ ਹੋਵੇ ਜਿਹਨੂੰ ਜਿਆਦਾ ਤੇ ਹੋਵੇ ਜੋਰ ਜਲੂ ਮਥੂ ਲੋਕੜ ਤਾਂ ਕੇ ਇਹਨਾਂ ਸੰਜਮੀ ਤੇ ਜਿਹੜਾ ਤੂੰ ਵਧਿਆ ਫੁੱਲਿਆ ਜੀ ਤੇਰੇ ਨਾਲ ਉੱਥੇ ਡਰੈ ਤੈ ਤੇਰੇ ਨਾਲ ਰਹਿ ਤਾ ਅਗਰ ਤੇ ਜੋਰ ਜਲੂ ਤੇਰੀ ਚᱹਈ ਹੈਗਾ ਤਾਂ ਪੈਦਾ ਹੋ ਜੂਗਾ ਜੇ ਤੂੰ ਸ਼ਕਤੀ ਦੇ ਤੀਜੇ ਸਾਥ ਜੋਰ ਕਰਕੇ ਕਰਕੇ ਭਗਤ ਤੋਂ ਮਨਾ ਕੋਈ ਐਸਾ ਬੰਤਾ ਜੀ ਹੋ ਸਕਦਾ ਜਿਹਦੇ ਹੱਥੇ ਸ਼ਕਤੀ ਹੋਵੇ ਔਰ ਇਸਤੇ ਬਰਨ ਨਾ ਤਾਣ ਹੋਏ ਤੇ ਤਾਣਾ ਬਹੁਤ ਔਖਾ ਸੰਭਲਦਾ ਭਗਤ ਦੀ ਬਵਸਤ ਤਾਣ ਤੇ ਸਾਹ ਜੋਰ ਕਰਕੇ ਵੇਖ ਸੋ ਤਾਂ ਵਰਤਦਾ ਹੈ ਪਲਵਾਨ ਵੀ ਵਰਤਦਾ ਕੋਈ ਕੰਮ ਸਾਰੇ ਵਰਤ ਪੈਸੇ ਦਾ ਜੋਰ ਵੀ ਵਰਤਦਾ ਸੁਤ ਉੱਤੇ ਦਾ ਜੋਰ ਵੀ ਵਰਤਦਾ ਸਤਾ ਸਰੀਰ ਦਾ ਜੋਰ ਵੀ ਵਰਤਦਾ ਬਖ ਦਾ ਜੋਰ ਵੀ ਵਰਤਦਾ ਜਿਹੜਾ ਸੇ ਤਕੜਾ ਹੁੰਦਾ ਦੂਰੇ ਨੂੰ ਲੱਭ ਲੈਂਦੇ ਜਾਂਦੇ ਬਹਾਨਾ ਕੋਈ ਬਣਾ ਪੇ ਚਾਹ ਜਾਂ ਉਹ ਲੈ ਨੂੰ ਖਾਣਾ ਭੇੜੀਏ ਨੇ ਬਹਾਨਾ ਦਾ ਕੋਈ ਵੀ ਹੋ ਜਾਂਦਾ ਕਦੇ ਨਹੀਂ ਹੋ ਸਕਦਾ ਕਿ ਜੋਰ ਕਰੇ ਜਾਂ ਹੱਥ ਜੋਰ ਹੋ ਔਰ ਉਹ ਜੋਰ ਮੇਂ ਝੁਲਬ ਬਣ ਜਾਂਦਾ ਕਰਕੇ ਵੇਖਦਾ ਫਿਰ ਹੁਣ ਇਹ ਦੋ ਆਇਸ਼ ਕਰਦਾ ਕਿਹਦੀ ਬਲਦੇ ਹੈ ਤੇ ਜੋਰ ਜਦੋਂ ਫੁੱਲ ਲੋਕਾਂ ਨੂੰ ਇੱਥੇ ਆਇਆ ਇੱਥੇ ਹੀ ਹੈ ਕੱਲੇ ਆਈ ਸੀ ਜਦੋਂ ਬਣੀ ਨੇ ਕਾਤੇ ਉਹਨੇ ਜੀ ਜੋੜ ਜੁਲਮ ਫੂਲੇ ਕਾਓ ਹਾਂ ਦੁਬਾਰਾ ਕਾਚੀ ਦੇ ਬਤੀ ਦੇ ਵਿਕਾਰ ਹਾਂ ਜੀ ਕਾਚੀ ਦੇ ਜੋੜ ਜੁਲਮ ਫੂਲੇ ਕਦੋਂ ਕਾਚੀ ਦੇ ਸਾਰਿਆਂ ਨੂੰ ਯਾਹ ਉਹ ਜਿਹਨੇ ਨਾ ਚਲ ਕਹੋਦਾ ਮੀਂਹ ਡਿਆ ਰਿਹਾ ਗਾਤਾ ਹਲਾਗੇ ਰੱਖ ਤੇ ਸਾਰੇ ਹੋਰੀ ਸਿੱਖ ਚੋ ਸੰਸਾਰ ਦੀ ਤਾਂ ਸਾਡੀ ਇੱਛਾ ਵਾ ਦੇ ਗੱਲੀਆਂ ਪਗਤੀਆਂ ਹਲਾਗੇ ਰੱਖਣ ਦੀ ਇੱਛਾਵਰ ਜ਼ਾਲਮ ਜਿਹੜਾ ਹਾ ਸ਼ਕਤੀਆਂ ਬਗੜੀਆਂ ਜ਼ਾਲਮ ਫੋੜ ਦੇ ਬਰਾ ਜੋਰ ਜੁਰਮ ਖੁਲੋ ਬਣ ਖੁਲੋ ਹਮਨੇ ਕਾ ਨੋ ਸੰਸਾਰੀ ਸ਼ਕਤੀ ਨਹੀਂ ਮਿਲੀਦਾ ਬਖਸ਼ਿਸ਼ ਹੈ ਹਾਂ ਹਾਂਜੀ ਕਿੰਨਾ ਦੁੱਖ ਭੂਖ ਸਦਮਾਰ ਇਹ ਤੇਰੀ ਦਾਤ ਸਾਡਾ ਦ੍ਰਿਸ਼ਟੀ ਕੋਲ ਉਲਟਾ ਸਭ ਸਾਰੇ ਦ੍ਰਿਸ਼ਟੀਕੋਣ ਨਾਲ ਹੈ ਸਾਡੇ ਕੋਲ ਸਭ ਸਾਰੇ ਦ੍ਰਿਸ਼ਟੀਕੋਣ ਇੱਕ 360 ਡਿਗਰੀ ਤੇ ਇੱਕ ਦੋਲਟਾ ਹੈ ਜਹਾਂ ਤੱਕ ਦੇ ਪਰ ਹਰ ਇੱਕ ਬੰਦਾ ਜ਼ੋਰ ਜ਼ੋਰ ਮੰਗਦਾ ਉੱਥੇ ਹੰਕਾਰ ਮਾਇਆ ਦਾ ਹੈ ਬਿਲਕੁਲ ਜਿਹੜਾ ਜ਼ੋਰ ਮੰਗਦਾ ਸਾਖਤ ਹੈ ਜਿਹੜਾ ਜੋਰ ਆਪਣਾ ਮੰਨਦਾ ਹੈ ਸਾਕਤ ਹੈ ਅਤਿ ਪੁਰਾਣੇ ਧਰਮ ਦੇ ਵਿੱਚ ਜਿੰਨੇ ਵੀ ਨਾਮ ਜੱਬੇ ਸਾਹਮਣੇ ਸਾਹਮਣੇ ਜੋਰ ਇਹ ਮੰਗਿਆ ਸ਼ਕਤੀਆਂ ਮੰਗੀਆਂ ਨੇ ਇੱਥੇ ਇੱਥੋਂ ਜਾ ਕੇ ਤੁਹਾਨੂੰ ਪਤਾ ਲੱਗਣਾ ਕਿ ਉਹ ਕਿੱਥੇ ਗੱਲੇ ਨੇ ਗੱਲ ਕੀ ਹੈ ਇੱਕ ਦਮ ਉਲਟ ਹੈ ਇੱਕ ਉਲਟ ਹੈ ਸਾਰੇ ਉਹ ਜਿਹੜਾ ਤ੍ਰਿਆ ਜਿਰਤ ਤੁਸੀਂ ਤੇ ਕਹਿੰਦੇ ਕਿ ਇਹ ਬਾਣੀ ਦੀ ਸਮਝ ਤੋਂ ਬਣਾ ਤ੍ਰਿਆ ਜਿਰਤ ਜਿਹੜਾ ਹੈਗਾ ਹੰਕਾਰ ਤੋਂ ਇਹ ਪਹਿਲੋਂ ਹੋਮੇ ਨੂੰ ਮਾਰ ਕੇ ਫਿਰ ਪੜਨਾ ਹਾਂ ਨਹੀਂ ਤਾਂ ਉਹ ਬੁੱਧੀ ਪੜ ਲਵੇ ਲਿਖ ਲਵੇ ਹਾਂ ਦਾ ਕੋਈ ਵਿਦਵਾਨ ਨਹੀਂ ਸੀ ਅਭੀ ਕਾਬਜ਼ੀ ਤਿਰਿਆ ਜਨਤ ਲਿਖਦੇ ਨੇ ਨਾ ਕਿਸੇ ਦਾ ਬਸ ਪੂਰੀ ਅਵਸਥਾ ਤੋਂ ਇਹ ਤੋਂ ਉੱਤੇ ਨਹੀਂ ਉਹਨਾਂ ਨੇ ਕਿ ਪੁੱਛੇ ਦੋ ਚੰਦਰ ਨਾਟਕ ਪ੍ਰਭੋ ਚੰਦਰ ਨਾਟਕ ਪੈਦਾ ਕਰਕੇ ਲਿਖਿਆ ਹੋਇਆ ਹਾਂ ਹਾਂ ਛੁਪ ਦਾ ਉਤਾਰ ਉਹ ਰਗਾ ਆਪਣਾ ਬਚਨਦਰ ਰਾਜ ਇਸ ਤੇ ਪੈਦਾ ਹੋਇਆ ਬਚੀ ਦੇ ਬੇਟੇ ਬਚਨਦਰ ਰਾਜ ਨੇ ਫੇ ਦੱਸਿਆ ਬਚਨਦਰ ਨਾ ਤੇ ਕੋਈ ਖੈਰੋ ਵੀ ਖਾਣ ਆਇਆ ਹੋਇਆ ਉਹਦਾ ਇਹ ਰਾਜਨ ਇੱਕ ਐਸਾ ਰਾਜਾ ਹੈ ਜਿਹੜਾ ਜੋ ਤੇ ਤੇ ਜਿਤਰੀ ਕਹਦਾ ਕੌਲਦਾ ਤੇਰਾ ਬੋਲ ਹੂੰ ਇੱਕ ਹੀ ਗੱਲ ਤੇ ਤੇਰੀ ਜਿੱਤ ਹੈ ਹੂੰ ਹਾਂ ਬਚਾਰ ਤੂੰ ਕੱਲ ਨੂੰ ਮੈਨੂੰ ਦੱਸੀ ਹੈ ਰਹੀ ਹੈ ਇਹ ਬਰੇ ਤੇ ਮਾਵਾ ਸਹੀ ਜਾਵੇ ਇਹ ਕੈਪਟਰ ਉਹਦੇ ਵਿਚ ਦਾ ਸੁਖਰਾ ਤੇ ਚ ਇੱਕ ਕਾਉਂਡ ਲਿਖ ਲੂਗਾ ਹੈ ਚੈਪਟਰ ਕੋਈ ਤਰੀਆ ਕੋਈ ਵੀ ਪ੍ਰਮੋਚ ਚਰਨ ਨਾਟਕ ਖਰਾ ਦੀ ਉਤਰ ਦਾ ਬਾਣੀ ਦੇ ਸਵਾਇਓ ਤੇ 10 ਨੰਬਰਾਂ ਛਾਲੇ ਦੂਜੇ ਵੀ ਪੜੇ ਨਿ ਪੜਲੇ ਬਲਾਗ ਤੋਂ ਪੜਲੇ ਤੇ ਪੜਿਆ ਹੀ ਪ੍ਰਧਾਨ ਗੁਰਪ੍ਰਸਾਦ ਪਰਮਾਤਮਾ ਪਰਮ ਦਾ ਆ ਬਾਚ ਪੈਦਾ ਹੁੰਦਾ ਜਾਂ ਸ਼ਰੀਰ ਦਾ ਆਡ ਕਰਦਾ ਉਹ ਉਹਦਾ ਪੈਦਾ ਹੁੰਦਾ ਪਹਿਲਾਂ ਮੈਂ ਇਹ ਨਹੀਂ ਕਹਦਾ ਪਰੋਂ ਪਹਿਲੋਂ ਹਰ ਬੈਲੋਂ ਪਰਮਾਤਮਾ ਦੇ ਜਨਮ ਜਾਨਵਰ ਦਾ ਕਾਰਨ ਪਰ ਉਹ ਉਹ ਨਹੀਂ ਹੈ ਹੂੰ ਉਹ ਤਾਂ ਸਿਰਫ ਦੁਬਾਰਾ ਜਨਮ ਦਾ ਕਾਰਨ ਦੁਬਾਰਾ ਜਨਮ ਦਾ ਕਾਰਨ ਦੁਬਾਰਾ ਜਨਮ ਦਾ ਕਾਰਨ ਉਹ ਮਾਇਆ ਜਾਨਾ ਨਹੀਂ ਜਾਂਦਾ ਹੂੰ ਉੱਤੇ ਜੁੜਿਆ ਹੈ ਦੋਰਾ ਜਨਮ ਦਾ ਗਾਣਡ ਹੈ ਪਹਿਲੇ ਜਨਮ ਦਾ ਕਾਡ ਭਰੂਆ ਬਾਕੀ ਸਾਰੇ ਹੈ ਪਛਾਦ ਪਹਿਲੇ ਜਨਮ ਦਾ ਕਾਡ ਹੋ ਨਹੀਂ ਹੈ ਕਿਉਂਕਿ ਪਰ ਹੀ ਨਹੀਂ ਬਾਕੀ ਨਾਲ ਗਾਲ ਤਾਂ ਵੋਏ ਵੜੀ ਜਨਾ ਪਰ ਉਹਦੇ ਕੋਈ ਜਿਆਦੇ ਕਸੈਲੋਪਤੀ ਪੈਦਾ ਕਰ ਲਿਆ ਹਮ ਜਦੋਂ ਅੱਜੇ ਲੈ ਲਈ ਜਾਂਦਾ ਰਾਜਾ ਨੂੰ ਜੂੜ ਜਿਹੜਾ ਕੰਮ ਕਰੀ ਜਾਂਦਾ ਲਾਲਕ ਵਿਆਹ ਹੋਈ ਵਿਆਹ ਹੈ ਵਿਆਹ ਦਾ ਪਤਾ ਹੈ ਇਹ ਤਾਂ ਪਤਾ ਵੀ ਉਹ ਕਾਰ ਦੇ ਕਾਸ਼ੀ ਜਿਹੇ ਉਦੇਸ਼ ਕਰਦੇ ਨੇ ਵੀ ਇਹਨਾਂ ਨੂੰ ਤੂੰ ਆਪਣੇ ਨਵਾਂ ਨੂੰ ਹੁਣ ਮਰਤੀ ਵਾਰ ਮਰਤੀ ਵਾਰ ਉਹਨੂੰ ਕਰਦੇ ਗੋਸ਼ ਨੂੰ ਸਾਰੀ ਜ਼ਿੰਦਗੀ ਉਹ ਪਾਲਦਾ ਉਹਦੇ ਛੜ ਲੱਗੇ ਉਹਦਾ ਸਾਰੀ ਜ਼ਿੰਦਗੀ ਜਾਂ ਪੱਕਾ ਕੀਤਾ ਫਿਰ ਤੂੰ ਐਂਡੀ ਹੋਸ ਬੈਠ ਹਾਂ ਹਾਂ ਕਰੀ ਜੇ ਤਾਂ ਉਤੋਂ ਉਤ ਬਿਜਾਰਾ ਪਰ ਅੰਦਰ ਤਾਂ ਜਿਹੜਾ ਉਹਦੀ ਅਟੇ ਤਦੜੀ ਇਹ ਜਿਹੜਾ ਕ ਵੀ ਚਲੀ ਗਿਆ ਹਾਂਜੀ ਧਾਰਾ ਧਾਰਾ ਤੂੰ ਜਿਹਨਾਂ ਵਿਆਪੇ ਨਾਂਕ ਮਤਲਬ ਤੂੰ ਸੋਚ ਲੈ ਸੋਚਣੀ ਬਾਅਦ ਹੈ ਤੇ ਜਾ ਚੂੜ ਨੂੰ ਮੇਰੇ ਤਮਾਰੋ ਆਰਾਮ ਨਾਲ ਸੋ ਕਰ ਬਿਵਹਾਰੋ ਜਿਹੜਾ ਬਿਟੂਗਾ ਐਡੀ ਛੇਤੀ ਬਿਟਣਾ ਆਰਾਮ ਨਾਲ ਬਿਹਰ ਕਰ ਜਿੱਤੋਂ ਨਾ ਮਿਲਦਾ ਲੈ ਗੱਲ ਦੇ ਇਹਦੇ ਨਾਲ ਬਿਟ ਜੂਗਾ ਕਿਉ ਅਕਲ ਆ ਜੂਗੇ ਇਹ ਰੋਕ ਲੇ ਰਾਉਂਦਾ ਦੇ ਬਿਹਾਰ ਵੱਲ ਬਿਟੂਗਾ ਪਹਿਲਾਂ ਨਹੀਂ ਬਿਟਣਾ ਚੂੜ ਇਹ ਚੱਲਦਾ ਰਹੂਗਾ ਹੌਲੀ ਹੌਲੀ ਬਿਟ ਜਾਊਗਾ ਹੌਲੀ ਹੌਲੀ ਕਲਪਨਾ ਛੁੱਟੂਗੀ ਇੱਕ ਦਰਦੀ ਛਟਣੀ ਜਿਉ ਜੋ ਗਿਆਨ ਹੁੰਦਾ ਚਲਾ ਜਾਊਗਾ ਲਾਦੀ ਝਲੀ ਹੁੰਦੀ ਚਲੀ ਜਾਊਗੀ ਕੋਬਸਤੂ ਵੀ ਪ੍ਰਾਪਤ ਹੁੰਦੀ ਚਲੀ ਜਾਊਗੀ ਬੁੱਧ ਦਾ ਬਲ ਬੱਧਾ ਚਲਾ ਜਾਊਗਾ ਦੇਖੋ ਕੁਝ ਜੀਰੋ ਸੰਦਲ ਤਾਕਤ ਵੀ ਚਾਹੀਦੀ ਏ ਤੋੜਵਾ ਚ ਅਤੰਜੀਦਨ ਮੰਨੀ ਹੋਈਆਂ ਪਹਿਲਾਂ ਇੱਕ ਡੱਗਾ ਰੋ ਪਤਲੀ ਜਿਹੀ ਸੱਬਲੀ ਦਾ ਬੰਦ ਕੇ ਸੱਬਲ ਵੀ ਤੋੜ ਦਿੰਦੇ ਹੂੰ ਜਿਉਂ ਜਿਉਂ ਉਹਦੀ ਸ਼ਕਤੀ ਵਧਦੀ ਜਾਂਦੀ ਹੈ ਸੱਬਲ ਮੋਡਾ ਜਾਂਦੇ ਇਹ ਆਪਣਾ ਸੰਗਲ ਮੋਟਾ ਆ ਜਾਂਦਾ ਕੋ ਕਿਰ ਕਨੈਨ ਕੋਲ ਆਪਣਾ ਸੁੱਟ ਵੋਟਾ ਕਰੀ ਜਾਂਦਾ ਵੈਲਡਿੰਗ ਵੀ ਇਤ ਸੰਭਲ ਕਮਜ਼ੋਰ ਹੋ ਗਿਆ ਮੇਰਾ ਬੜੇ ਵੈਲਡਿੰਗ ਹੋ ਗਿਆ ਜੀ ਜਾਂਦਾ ਇਹਦਾ ਨਕਲ ਆਪਣਾ ਆਪ ਵੋਟਾ ਕਰੀ ਜਾਂਦਾ ਸਮਾਂ ਪਹਿਲਾਂ ਜਿਹੜਾ ਛੋੜ ਉਹ ਸਾਥ ਹੈ ਜਿਹਨੂੰ ਛੋੜ ਰਿਹਾ ਇਹ ਜੋ ਚੋਰਾ ਨਹੀਂ ਉਹ ਬੁਰਖ ਹੈ ਜਾਂ ਸਖਤ ਬੰਨਾ ਚਾਹੁੰਦਾ ਰਾਜ ਹੁੰਦਾ ਹੈ ਸਿੱਧੀ ਗੱਲ ਜੇ ਚੋਰਾ ਹੈ ਨਹੀਂ ਚੋਰਾ ਖਤ ਬੇਰਾ ਹੈ ਚਲਾ ਗਿਆ ਚੋਰਾ ਤੇ ਬੇਰਾ ਦਾ ਸਖਤ ਸਖਤ ਕਾਤੇ ਬੇਰੇ ਕਿਸੇ ਦੀ ਚੀਜ਼ ਤੇ ਕਬਜ਼ਾ ਕਰ ਲੋ ਜਣਾ ਤਾਂ ਹੁੰਦਾ ਰੱਬ ਦੀ ਚੀਜ਼ ਤੇ ਕਬਜ਼ਾ ਇਸ ਉਹ ਤਰ੍ਹਾਂ ਬੁੜਾ ਇਹ ਕਾਜਾ ਉਹ ਤਾਂ ਕਰਦਾ ਕਾਜਾ ਕਰ ਨਹੀਂ ਸਕਦਾ ਕਾਜਾ ਤਾਂ ਇਹ ਨਹੀਂ ਕਾ ਆਪਰੇ ਬੱਚੇ ਕਾਜਾ ਦੇ ਆਪਣੇ ਕਾਜਾ ਦੇ ਕਾਪਸ਼ਾ ਕਾਜਾ ਕਾਜਾ ਕਾਜਾ ਕਾਜਾ ਕਾਜਾ ਸਾਡੇ ਕੋਲ ਹੈ ਮੋਗਤ ਜੀ ਦਾ ਹੂੰ ਕਿਰਾ ਮੰਤਰੋਂ ਵਰਹਾ 70 70 ਸੰਤਾ ਮੰਤਰੋਂ ਵਰਦਾ ਨੋਤਾ ਇਹਦੇ ਵਿੱਚ ਵੀ ਆਇਆ ਵੰਡਿਆ ਆਇਆ ਆਇਆ ਦੁਜੀ ਦਾ ਹੋ ਜਾਂਦਾ ਹੈ ਮੋਗਤ ਦੇ ਉਹ ਰਕਾਉ ਜਾਂ ਕਾਂਜੋ ਜੀ ਨਾ ਕਹਿੰਦੇ ਕਾਜਾਂ ਦਾ ਸਾਡਾ ਹੈ ਉਹ ਕਹਿੰਦੇ ਕਾਜਾਂ ਵਾਲਾ ਤੁਸੀਂ ਰੱਖੋ ਇਹ ਕਾਜਾਂ ਦਾ ਵਿਆਹ ਹੈ ਲੈ ਆਪਣਾ ਮੋਕੇ ਤੇ ਕਬਜ਼ਾ ਹੈ ਮੋਕੇ ਤੇ ਸੌਦਾ ਹੀ ਹੈ ਉਹ ਨਹੀਂ ਹੈ ਤਾਂ ਹੀ ਘਾਟਾ ਵੱਧ ਉਹਦੇ ਹੱਥ ਚ ਮੋਕੇ ਤੇ ਕਬਜ਼ਾ ਜਿਹਦਾ ਘਾਟਾ ਵੱਧ ਉਹਦੇ ਹੱਥ ਚ ਹੈ ਜੀ ਜਾ ਕੇ ਇਹਦਾ ਭਾਅ ਉਹ ਕੌਣ ਜੈਦੀ ਦੇ ਹੱਤੇ ਵਿੱਚ ਦੂਜੀ ਭੌਗ ਦਾ ਭੁੱਖ ਦੀ ਭੋਗ ਦਾ ਜਿੰਦਾ ਭੁਖਾਊਗਾ ਵੀ ਆ ਨਾਮ ਤੋਂ ਫਿਰ ਹੋਰ ਕੋਈ ਭੁੱਖ ਹੈ ਪਾਇ ਦੀ ਭੁੱਖ ਕਿਸ ਕੋਈ ਵੀ ਹੋ ਸਕਦੀ ਹੈ ਉਹ ਜੀਨੇ ਮਨ ਦੇ ਵਿੱਚ ਭੁੱਖ ਹੋਵੇ ਵੱਡਾ ਵੱਡ ਦੀ ਭੁੱਖ ਹੋਵੇ ਸੁਰਗ ਦੀ ਭੁੱਖ ਹੋਵੇ ਗਾਵੀ ਸੁਣੀਏ ਮਨ ਰੱਖੀਏ ਭਾਓ ਭੁੱਖ ਰਹੇਗੀ ਆਹ ਸਾਚੇ ਰੋ ਵੀ ਭੁੱਖੇ ਰਹੀ ਹੈ ਉਹ ਆਪਣੇ ਕਾਵਲਾ ਸੁਣੋ ਸੋਰ ਪ੍ਰੇਮ ਕਹਿੰਦੇ ਕੀ ਭੋਗਨ ਤੋਂ ਪ੍ਰੇਮ ਨਹੀਂ ਜਾਂ ਚਲੇਂਦੇ ਨੀ ਆਉਂ। ਜਬੀ ਇਹ ਰੋਗ ਜਬੀ ਇਹ ਆਸ ਹੈ ਨਾ ਪ੍ਰੇਮ ਕਿਉਂ ਤੋ ਹੱਸਦਾ ਜਾਂ ਜਾਈਏ ਭੁੱਖਾ ਪ੍ਰੇਤ ਨਾਲ ਆਇਆ ਹੈ ਭੁੱਖ ਵੀ ਨਾਲ ਆ ਪ੍ਰੇਮ ਵੀ ਨਾਲ ਹੋ ਸਕਦਾ। ਔਲਾਦ ਵੀ ਭੁੱਖ ਹੁੰਦੀ ਹੈ ਨਾਮ ਰੇਮ ਉਹ ਖਤਰਨਾਕ ਹੀ ਜਿਆ ਪ੍ਰੇਮ ਲੋਵੀ ਉਹ ਕਮਾ ਪਹਿਲਾ ਪ੍ਰੇਮ ਬਾਅਦ ਚ ਪਹਿਲਾਂ ਭੁੱਖ ਹੈ ਪਹਿਲਾਂ ਲੋਡ ਹੈ ਹੈ ਗੱਡੀ ਫੇਰ ਫੇਰਦਾ ਹੈ ਬਾਅਦ ਚ ਸਮਝੋ ਆਖਦਾ ਬਾਅਦ ਚ ਆ ਜਾਂਦੀ ਪਹਿਲਾਂ ਤਾਂ ਭੁੱਖ ਹੈ ਫਿਰ ਲੱਗਦਾ ਫਿਰ ਉਹਦਾ ਮੰਜ ਵੰਦਾ ਓਏ ਉਹਦਾ ਬਾਅਦ ਦੇ ਵਿੱਚ ਹੈ ਨਹੀਂ ਪਹਿਲਾ ਭੁੱਖ ਹੈ ਮੈਂ ਜੰਮੇ ਤੇ 3 ਦਿਨਾਂ ਦੀ ਤੇਲੀ ਰੋਣੀ ਇਹ ਦੋ ਨਾਂ ਦੀ ਲੀਕ ਤੇ ਹੁੰਦੀ ਆ ਉਹ ਐਂ ਨਾਲ ਬਰਤ ਵਿੱਚ ਰੋ ਉਹ ਗੋੜੀ ਨਾਲ ਲੱਗੀ ਜਾਂਦੀ ਉਹ ਤਾਂ ਬਾਤ ਪਹਿਲਾ ਭੁੱਖ ਹੈ ਭੁੱਖੀ ਭੁੱਖੀ ਪਰ ਗੇੜਾ ਕਿ ਨਹੀਂ ਲੱਗੀ ਆ ਰੋਟੀ ਪਿੱਛੇ ਜਾਨਵਰ ਲੜਦੇ ਨੇ ਹੋ ਲੜਦੇ ਨੇ ਕੋਈ ਚੀਜ਼ ਪੜ ਜਾਂਦੀ ਹੈ ਵਿਆਹ 베ਰੀਆ ਤੇਰੀ ਆ ਉਹ ਤਾਂ ਬਾਤ ਹੀ ਕਰਦੇ ਪਹਿਲਾਂ ਭੁੱਖਾ ਜਿਹੜਾ ਕਿਹਾ ਬੁਰੇ ਭక్తి ਭੋਖੜੀ ਬਕਤੀ ਹੈ ਕੋਖੜੀ ਬਕਤੀ ਹੈ ਭੋਖ ਭਗਤੀ ਦੀ ਭੁੱਖ ਹੈ ਸਿਰਫ ਭਗਤੀ ਦੀ ਭੁੱਖ ਹੈ ਕੇਵਲ ਭਗਤੀ ਦੀ ਕਰਦੀ ਭੁੱਖ ਹੈ ਭੁੱਖ ਕੋਈ ਹੋ ਰਿਹਾ ਭਗਤੀ ਕਰ ਰਿਹਾ ਹਾਂ ਕੋਈ ਹੋ ਪ੍ਰੇਮ ਕਬਾਇਤ ਹੋ ਗਈ ਤੁਸੀ ਕਿਵੇਂ ਕਰ ਲਓ ਕਿਵੇਂ ਭਗਤੀ ਕਰ ਰੇ ਬੁਖੋਰ ਹੋ ਸਕਦੀ ਹੈ ਤਾ ਜਾ ਕੇ ਜਿਹਦੇ ਭਾਉ ਹੈ ਦੁਇਆ ਦੁਆ ਹੋਰ ਦਾ ਭਗਤੀ ਤਾਂ ਕਰ ਰਹਾ ਸਿਰਫ ਭਗਤੀ ਕਰਨ ਦੀ ਭੁੱਖ ਹੈ ਭਗਤੀ ਕਰਨ ਦੀ ਭੁੱਖ ਹੋਰ ਭੁੱਖੇ ਦੀ ਕੋਈ ਆ ਇਸ ਭਗਤੀ ਦਾ ਫਰੇਮ ਉੱਪਰ ਨੂੰ ਤਾਂ ਉਹ ਚੀਜ਼ ਨਾ ਬਰੇਵ ਹੈ ਕਿਰੀ ਦੀ ਪ੍ਰਾਪਤੀ ਜੀ ਧਿਆਨ ਤਾਂ ਉਥੇ ਹੈ ਆ ਚੀਜ਼ ਪ੍ਰਾਪਤੀ ਹੋਈ ਜਗ ਕਰ ਰਹੇ ਨੇ ਰਾਸ ਨਿਕਲਦੇ ਜੀ ਨਿਕਲਿਆ ਬਹੁਤੀਆਂ ਪਾਉਂਦੇ ਨੇ ਬਦਰ ਵੀ ਪਰ ਧਿਆਨ ਤਾਂ ਉਹ ਚਾ ਇਹ ਪੈਦਾ ਹੁੰਦਾ ਰੋਕ ਹਵਨ ਕੋਲ ਜਿਉਂ ਦੀਦਾ ਹੈ ਤੇ ਆਹ ਵਿੱਚ ਆ કરી 잡 ਕੋ ਜਾਂਦੇ ਜੀ ਜਦੋਂ ਤੁਸੀਂ ਦੇਖੋਗੇ ਉਹ ਉਹ ਦੇਵੀ ਪ੍ਰਗਟ ਹੋਊਗੀ ਲਾੜ ਵਿੱਚ ਉਬਰਚੋ ਧਿਆਨਤਾ ਦੇਵੀ ਜ ਉਹਦਾ ਬਿਦੌਰਦਾ ਉਹਦੀ ਹਰ ਵਕਤ ਉਹਦਾ ਕਰੀ ਜਾਂਦੇ ਨੇ ਸਭ ਕੋ ਸ਼ਰ ਬੰਦਰ ਮੂਨਾ ਪੜਦੇ ਨੇ ਹੱਥਾਂ ਨੂੰ ਉਹ ਵੀ ਪਾਈ ਜਾਂਦੇ ਨੇ ਉਹਦੋਂ ਉਹ ਦੇ ਦੇ ਵੀ ਕਦ ਹੋਈ ਕਦ ਹੋਈ ਕਦ ਹੋਈ ਕਦ ਹੋਈ ਹੁੰਦਾ ਉੱਕਪੋ ਖੜੀ ਲੀਏ ਉਹ ਖੱਚੀ ਤੇ ਅਗਰ ਉਹ ਪਾਣੀ ਦੀ ਜੇ ਪਿਆਸ ਹੈ ਪਾਣੀ ਤੇ ਤਾਂ ਅੰਗ ਨਾ ਮਰ ਰਿਹਾ ਹੈ ਤਾਂ ਪਾਣੀ ਤੇ ਕੁਛ ਨਹੀਂ ਕਰ ਸਕਦਾ ਉਹ ਰੋ ਲਹਿਰਾ ਜੀ ਅਭੀ ਇਹ ਜੱਦੀ ਵੀ ਦਰਿਆ ਚੱਲਦਾ ਹੈ ਹਾਂ ਚੱਲਦਾ ਚੱਲਦਾ ਧਿਆਲ ਹੈ ਖਿਆਲ ਨਹੀਂ ਪਾੜੀ ਹੈ ਪਾਣੀ ਦਾ ਸੁਪਨਾ ਦਲਦਾ ਉਹਨੂੰ ਅਸਾਂ ਚ ਪਾਣੀ ਹੈ ਜੀ ਉਹ ਬਰਗਤ ਰਿਸਪਦਾ ਜਲ ਜੜੀ ਹੈ ਪਾਣੀ ਉਹ ਪਾਣੀ ਉਹ ਪਾਣੀ ਉਹ ਪਾਣੀ ਉਹ ਧੀਦੇ ਪਾਣੀ ਉਹ ਹੋਰ ਕੋ नहीं ਕਿਛਾਈਦੇ ਪਾਣੀ ਲੋੜ ਹੈ ਪਾਣੀ ਐਦੋ ਨਿਆ ਪਾ ਜਿਉ ਪੈਟਰੋਲ ਹੋਵੇ ਕੋਈ ਕੰਮ ਰੋ ਕੰਮ ਲੱਗਦਾ ਸਾਰੇ ਕਹੀਦੇ ਹਾਂ ਲੱਗਦਾ ਜੀ ਜੀ ਹਾਂ ਕਾਈ ਚਰਹ ਕਸਮਲ ਪਾਪ ਤੇਰੇ ਮਨੂਆ ਕਸਮਲ ਕਸਮ ਗਲਤ ਲਾਇਆ ਤੇ ਕੀ ਪੀਓ ਨੇ ਲਾਇਆ ਨਾ ਕਿਉਂ ਲਾਇਆ ਕਹਤੈ ਰੂਹੇ ਪਤਾ ਲੱਭ ਕਿੱਥੋਂ ਆਇਆ ਕਾਸ ਉਹ ਦਾ ਰਾਸ ਤੋਂ ਕਾਸ ਬਰ ਦਿੱਤੇ ਬਣਦਾ ਨਾ ਬਾਇ ਦੇ ਰਾਸ ਜੀ ਬਾਇ ਦੇ मतलब ਬਲਦਾ ਮਤਲਬ ਹੈ माया ਬਾਇ ਦੇ ਜਿਹੜੇ ਰਾਸ ਕਾਸਦੇ ਉਹਨਾਂ ਤੋਂ ਜਿਹੜੀ ਬੈਡ ਲੱਗੀ ਕਾਸ ਜਿਹੜੇ ਬਾਇ ਦੇ ਰਾਸ ਨੇ ਕਾਸ ਉਹਨਾਂ ਨੇ ਜਿਹੜਾ ਹਰਦਾ ਬਲੀਦ ਕਰਤਾ ਹੈ ਉਹ ਛੱਡ ਜੂਗੀ ਬਰਤ ਤੇ ਕਿਸੇ ਵੱਲ ਦਾਤੀ ਹੂ ਬਤੇ ਕਿ ਖਰਾ ਤਾ ਬਿਲਕੁਲ ਕੋਈ ਜਮਦ ਨਹੀਂ ਕੋਈ ਨਾ ਆਹੋ ਜਾਰ ਨਾ ਤਾਂ ਹੀ ਬਣੂ ਜੋ ਕੋਈ ਅਰਥ ਆ ਵੀ ਇਕੱਠੇ ਆ ਵੀ ਸਕਦੇ ਨੇ ਯਾ ਯਾ ਦਾ ਰੋ ਰੋ ਤਸਪੀਆ ਨਾ ਆਉਂਦਾ ਰਾਸ ਜਿਹੜੇ ਰੋ ਦਾ ਰਸਾ ਉਹ ਰਸਾ ਹੈ ਇਹ ਰਸ ਨਹੀਂ ਇਹ ਕਸ ਹੈ ਮਾਇਆ ਦੀ ਫਿਰ ਆਪਾਂ ਨੂੰ ਕੀ ਪਤਾ ਲੱਗੇ ਆਪਾਂ ਆਪਾਂ ਕਹਿੰਦੇ ਰਾਸ ਕਾਸ ਬਣ ਗਿਆ ਦਾਲ بگੜ ਜਾਂਦੀ ਖਰ ਨਾਲ ਜੀ ਜੀ ਕਸ ਕਾ ਕਥਿਆ ਗਈ ਕਥਿਆ ਗਈ ਉਹ ਕਸੇ ਹੈ ਉਹ ਕੀ ਹੈ ਨੁਕਸਾਨ ਕਰਨ ਵਾਲੀ ਹੈ ਅਰ ਬਾਇਆ ਜੀ ਜੇ ਕਸ ਬਣਦੀ ਹੈ ਤਾਂ ਕਸ ਮਰਜੀ ਰੱਖ ਸਾਡ ਨਾਮ ਨੂੰ ਕਸ ਬਣਦਾ ਹੀ ਹੈ ਉਹ ਵਰਤਾਂ ਵਾਇਆ ਕਸ ਬਣ ਜਦ ਤੁਰ ਸਬਰਤ ਰੱਖ ਲੋ ਤੁਸੀਂ ਤਿਹੇ ਦਾ ਦੇਖ ਲਓ ਕੀ ਕਿ ਬਿਠਾ ਪਾਣੀ ਹੈ ਤਿਹੇ ਕੀ ਰਸ ਸਰਾਵਾਂ ਫਰਕ ਪੈ ਜਾਊਗਾ ਇਹਨਾਂ ਦੇ ਰਸਾਂ ਦੇ ਵਿੱਚ ਫਰਕ ਪੈ ਤਾ ਰ ਹੈ ਦੱਸ ਸੰਵੇਲਾ ਕੈਗੂ ਦਾ ਗੱਲ ਜੀ ਜੇਕਰ ਉਹਦਾ ਨਾਵ ਦਾ ਰਸ ਨਹੀਂ ਕੱਸ ਵਰਸ ਟੇਸਟ بگੜ ਜਾਂ ਲੁਕਾਸ ਕਰਦੇ ਇਹ ਬੂ ਦਾ ਸਵਾਦ ਵਿਗਾੜਦੇ ਨੇ ਹੁਣ ਜਿਹੜਾ ਲੱਗ ਵਰਗਾ ਕੌੜਾ ਲੱਗ ਜਾਂਦਾ ਮਕੌੜੀ ਅੱਜ ਲੱਗਣ ਲੱਗ ਜਾਂਦਾ ਜਿਹੜੇ ਕੌੜਾ ਲੱਗਦਾ ਫਿਰ ਵਿਖਿਆ ਮਿੱਠੀ ਲੱਗਦੀ ਫਿਰ ਖਾਣ ਵਾਲੇ ਨੂੰ ਵੀ ਕੌੜੀ ਹੀ ਲੱਗਦੀ ਸਾਨੂੰ ਕੋ ਜਲਦੀ ਰੋਟੀ ਖਾਣ ਵਾਲੇ ਨੂੰ ਉਹਦਾ ਟੇਸ ਜਿਹੜਾ ਉਹਦੇ ਨਾਲ ਜਿਹੜਾ ਉਦੂ ਆਇਆ ਉਹਦਾ ਮਤਰਾ ਵਸ ਜਿਉ ਟੱਕਰ ਲਿਆ ਉਹਦੇ ਪਤਾ ਜੀ ਬਣ ਜਾ ਕਸ ਵੀ ਜਿਹੜੀ ਉਹ ਬਣ ਜਾਂਦਾ ਹਾਂ ਖਰਾ ਕੇ ਬਣ ਜਾਂਦੀ ਆ ਰਸਬੜਾ ਜਦੋਂ ਕਸ ਰਸ ਬਣ ਕੇ ਹਾਂ ਪਰ ਨਾਮ ਕਸ ਬਣ ਕੇ ਇੱਥੇ ਘਟ ਸਰੀਰ ਕੇ ਕਹ ਘਟ ਨਾਮ ਨਵਾ ਇੱਥੇ ਦਾ ਸਰੀਰ ਕੇ ਉਹ ਸਰੀਰ ਕੇ ਗਾਇਤਨ ਸਰੀਰ ਕੇ ਗਾਇ ਆਪਣੇ ਨਾਲੇ ਕੇ ਉਹ ਕਸ ਲੈ ਸਰੀਰ ਦਾ ਸੁਧਈ ਰਸ ਨਹੀਂ ਹੈ ਹਤਮਰਸ ਨਹੀਂ ਹੈ ਉਹ ਉਹਨੂੰ ਹਤਮਰਸ ਕਹਿਆ ਉਹ ਸਰੀਰ ਕੇ ਰਸ ਹੈ ਸਰੀਰ ਕੇ ਰਸ ਰਸ ਨੇ ਨਾਮ ਕਾ ਰਸ ਹੈ ਅੰਮ੍ਰਿਤ ਰਸ ਹੈ ਦੋਏ ਰਸ ਲਗ ਲਾ ਕਿਉਂਕਿ ਦੋ ਚੀਜ਼ਾਂ ਸਰੀਰ ਵੀ ਦੋ ਨੇ ਆਪਣੇ ਕੋ ਅਸਲ ਤੌਰ ਤੇ ਸਰੀਰ ਦੇ ਰਸਾਂ ਅੰਮ ਜਿਆਦਾ ਸੀ ਆਪਣੇ ਰਸ ਬੋਲ ਲਿਆ ਚਿੱਟੇ ਬੋਲ ਲਿਆ ਸੇਸ ਬੋਲ ਲਿਆ ਅੰਮ੍ਰਿਤ ਬੋਲ ਲਿਆ ਜਿਹਨਾਂ ਦੀ ਕਦਰ ਬੋਲ ਬਹੁਤ ਬਲਤਾ ਦੇਤੀ ਉਹ ਦੋ ਵਟਾਂ ਦੇ ਦਰੇ ਹੋ ਗਿਆ ਬੋਲਦਾ ਉਹ ਇੱਕੋ ਹੀ ਡੰਡੇ ਨਾਲ ਤੰਦੇ ਭਗਤ ਉਹ ਕਹਦੇ ਨੇ ਸਭਾਇਆ ਹੈ ਬਸ ਜੇ ਦੁੱਧ ਦਾ ਤਾਂ ਵੀ ਬਾਇਆ ਹੈ ਹੈ ਤਾਂ ਵੀ ਮਾਇਆ ਫਲ ਫਰੂਟ ਹੈ ਤਾਂ ਵੀ ਕੋਇਆ ਭਾਈ ਰੁੱਖੀ ਰੋਟੀក៏ ਵੀ ਮਾਇਆ ਜੇ ਕਿਉਂ ਦੇ ਵਿੱਚ ਪੂਰੀ ਉਪਕਾਇੀ ਹੋਈ ਹੈ ਸਭ ਨੂੰ ਉਹਨਾਂ ਬਾਤ ਵਿੱਚ ਕੋਈ ਚੀਜ਼ ਵਾਇਆ ਚਾਹ ਸਰੀਰ ਵੀ ਮਾਇਆ ਦਾ ਉਹ ਵੀ ਮਾਇਆ ਇਹ ਮਾਇਆ ਦਾ ਸਰੀਰ ਦੀ ਖਰਾਬ ਮਾਇਆ ਇਹ ਪੈਦਾ ਹੋਇਆ ਦਹ ਬੰਦ ਦੀ ਖਰਾਬ ਤਾਂ ਨਾ ਬੇ ਫੇਰ ਦੀ ਅਜਿਹਰਾ ਨਾਮੇ ਨਾਮਾ ਕਾਲਮ ਨਾਮਾ ਕਾਲਮ ਦੋ ਕਾਲਮ ਜਦੋਂ ਰੋਡ ਦੀ ਬੋਖ ਲਾਉਂਦੀ ਫਿਰ ਉਹ ਪਹਿਲਾਂ ਹੀ ਜਦੋਂ ਜਦੋਂ ਨਾਮ ਸਜਾਈ ਕਰ ਦਿੰਦੇ ਨੇ ਰੋਡ ਸਜਾਈ ਫੇਰ ਨਾ ਲੈ ਫੇਰ ਉਹ ਕਿਉਂ ਬੋੜਾ ਉਹ ਜੋ ਬੋੜਾ ਕਰ ਦਿੰਦਾ ਫੇਰ ਉਹ ਬੋੜਾ ਕਰ ਦਿੰਦਾ ਇਹਨੂੰ ਰੋਡ ਫੇਰ ਫੇਰ ਲੋਬ ਰਾਮਕੀਓ ਬੋੜਾ ਫੇਰ ਉਹ ਨਾਮ ਤਰੀ ਹੈ ਵੀ ਮੰਨਾ ਦਬੇ ਦਬਾ ਧਾਰੜੀ ਐ ਦਬ ਕੇ ਧਾਰੇ ਸਗਲੇ ਜੰਤ ਸਾਰੇ ਜੰਤ ਨਾਮ ਦੇ ਸੁੱਟਦੇ ਨੇ ਉਹ ਧਾਰ ਚੱਲਦੇ ਨੇ ਪਰ ਉਹ ਰਾਜੀ ਨਾਲ ਚੱਲਦੇ ਨੇ ਇਹ ਘੋੜਾ ਡੰਡੇ ਨਾਲ ਨਹੀਂ ਜਾਂਦਾ ਫਿਰ ਵੀ ਚਾਹੁੰਦਾ ਵੀ ਮੈਂ ਇਤਰੋ ਮੋੜ ਦਾ ਇਤਰੋ ਮੋੜ ਦਾ ਇਤਰੋ ਮੋੜ ਦਾ ਇਤਰੋ ਲੈ ਜਾ ਇਤਰੋ ਰਾ ਕਟਕੇ ਲੈ ਜਾ ਰਾਗਟਨੋ ਫਿਰ ਉਹ ਪਰ ਮੇਰੇ ਮਾਤਾ ਪਿਤਾ ਦੇ ਹਾਂ ਬੰਨੇ ਮਾਤਾ ਨਹੀਂ ਹਾਂਜੀ ਚੜੇ ਕਸਮਲ ਪਾਪ ਤੇ ਮਨੂਆ ਚੜਿਆ ਹੋਇਆ ਜਿਹੜੀ ਚੜ ਗਈ ਉਹ ਛੜ ਜਾਣ ਅਮਰਤ ਹਾਂ ਅੰਮ੍ਰਿਤ ਕਥਾ ਸੰਤ ਸੰਗ ਸੁਣਵਾ ਜਿਆ ਸੱਤ ਇੱਕ ਵਾਂਗ ਹੋ ਗਏ ਸੰਪਰਤ ਕਥਾ ਸੁਣੇਗਾ ਸ਼ਾਂਤ ਹੋ ਕੇ ਟਿਕ ਕੇ ਸੱਤ ਨੂੰ ਤੁਸੀਂ ਟਿਕ ਕੇ ਗਾਇ ਦੋ ਪੂਰਾ ਟਿਕ ਕੇ ਜਾ ਤੂੰ ਨਾ ਪੂਰਾ ਇੱਕ ਵਾਂਗ ਇਕਜੁੱਟ ਕੇ ਟਿਕ ਕਥਾ ਸੁਣੇਗਾ ਫੇਰ ਉਹ ਛੱਡ ਜਾਣਾ के टेक के दुष्टाई। दुष्टाई नहीं सुनता फिर चल अ चले काम क्रोध दृष्टाई दृष्टाई नहीं है कि दृष्टाई है रा रा है रा है आलतू दृष्टाई लाभ दैदी दृष्टाई लाभ दृष्टाई क्रोध क्रोध और ਪਰ ਉਸ ਤੋਂ ਤਾਂ ਇਹ ਸਾਰੇ ਛੱਡ ਜਾਣਗੇ ਕੀ ਨੇ ਮੈਣ ਕਸਬੜ ਖੈ ਕੀ ਇਸ਼ਾਰਾ ਉਹਨਾਂ ਦਾ ਲੋਏ ਦਾ ਲੋਏ ਦਾ ਫਾਕ ਕਸਬੜ ਦਾ ਲੋਏ ਦਾ ਹਸਤਾ ਕਾਹਨ ਗਰੋਧ ਜਿੱਦੜੇ ਗਏ ਨੇ ਦੀ ਘਰ ਨੂੰ ਗਈ ਆ ਗਈ ਹੈ ਦੋਸਤੋ ਦੂਜੇ ਦਾ ये की है माया वाले सोच ना है कोई दुष्टता रही है माया वाले तो तू कर सकता है कुछ भी कर सकता है मैं में इतनी दुष्टता है माया ज्यादा जा। हुक में नहीं जलता माया वाला पाप उड़ेते है जे माया वाला पाप होवे ते तो स्टाय क्यों버지 माया सोचे हुए दुष्ट कोई नहीं ਤੁਸ਼ਤ ਕਦੋਂ ਬੁੜਾ ਕੇ ਕੇ ਜਦੋਂ ਹੈ ਚਿੜੀ ਤੇ ਸਿੱਕਦਾਂ ਉੱਤੇ ਨਾ ਪੜਿਆ ਨੋਲ ਫਾਇ ਜਾਤ ਫਾਇ ਆਲੋ ਸੰਦ ਕਰ ਸਕਦਾ ਆਪਣਾ ਵੀ ਕਿਸੇ ਦਾ ਤੋਖਾ ਕੀ ਕਮਾ ਸਕਦਾ ਉਲਟੇਰਾ ਪਾਸੇ ਜਾਂਡ ਗੁੱਜ ਕੇ ਵੀ ਪਾਸੇ ਉਹ ਕੰਮ ਕਰ ਸਕਦਾ ਇਹ ਹੋ ਵੀ ਰਿਹਾ ਉਹ ਰਿਹਾ ਨਾ दुष्ट आदमी तू जे पाए दुष्ट आतव की अंदर भूख है तू जी नाम तो पोकोल चल जी जे संत तो उल्टे ਸਤ ਦੀ ਸਭ ਨੂੰ ਛਡੌੜ ਦੀ ਭੁੱਖ ਆਉਂਦੀ ਸਭ ਨੂੰ ਤਸੌਰੀ ਛਡਦੀ ਦੀ ਆਪ ਛੁੱਟਣ ਦੀ ਭੁੱਖ ਆਉਦੀ ਆਪ ਫਸਲ ਦੀ ਭੁੱਖ ਹੈ ਇਹ ਕੋਈ ਪਰਿਵਾਰ ਹੀ ਭਾਜੀ ਜਾ ਤਾਲੀ ਬੰਦਾ ਇਹ ਆਪਣ ਜਿਹਨੂੰ ਆਪਣਾ ਫਕਰ ਹੈ ਲੋ ਫਸੜਦਾ ਉਹਦੇ ਵੇਲੇ ਜਿਹੜਾ ਆ ਵੀ ਇਹ ਜਾਣਦੂ ਨਹੀਂ ਦੱਸਦਾ ਉਹ ਕਹਿੰਦਾ ਪਰਿਵਾਰੀ ਉੱਥੇ ਤਾਂ ਵੱਡਿਓ ਬੜੀ ਹੈ ਜਲਦੀ ਆ ਬੜੀ ਜਿਹੜੇ ਰਾਜੇ ਆਪਣੇ ਸਪਾਈ ਤਾਂ ਆਪੇ ਡਰਦੇ ਨੇ ਹੂੰ ਜਿਹੜਾ ਡਿਵਿਡੀ ਤਾਂ ਆਪੇ ਤੋਂ ਕੰਮ ਕਰਾਉਂਦੇ ਬਾਹਰ ਜਿਹੜੇ ਉਹਦੇ ਰਿਸ਼ਤੇ ਨਾਲੋਂ ਤਾਂ ਕਰਦੇ ਨੇ ਉਹ ਅਸੀਂ ਠੀਕ ਕਰਦੇ ਮੈਨੂੰ ਕਹਦੇ ਯਾਰ ਆਪਰੇ ਬੰਦੇ ਨੂੰ ਕਹਿੰਦਾ ਉਹ ਰਾਣੇ ਆਈਏ ਸਾਡਾ ਇੱਕ ਮਤਾਂ ਨਾ ਨਾ ਤਾਂ ਕਰ ਲੈ ਲੈ ਕੋਈ ਉਹ ਕਰ ਦਿੰਦੇ ਉਹ ਪੁੱਟ ਹੋ ਰਹੀ ਜਦ ਇਹ ਕਿਤੇ ਉੱਗ ਰੱਖੀ ਕਿਤੇ ਸੁੱਤੀ ਰੱਖੀ ਕਿਤੇ ਕੀ ਹੋਇਆ ਫਿਰ ਤੁਹਾਨੂੰ ਸਟਾਰਟ ਹੋਣਾ ਆਪੇ ਉਹਨਾਂ ਨੇ ਭਾਈ ਉਹਦੇ ਇਹ ਨੈਟਵਰਕ ਦੋ ਸਟਾਰਟ ਹੋਦਾ ਨੈਟਵਰਕ ਜਿਹੜਾ ਅਲੱਗ ਹੈ ਇਹ ਪੂਰਾ ਉੱਡਾਈ ਨੈਟਵਰਕ ਹੈ ਜਿਹੜਾ ਪਰਮੈਸ਼ਰ ਦਾ ਇੱਥੇ ਕੁਦਰਤੀ ਪਾਵਰ ਤੇ ਬੰਦ ਤੇ ਕੰਟਰੋਲ ਬੰਦ ਤੇ ਤੁਹਾਡਾ ਆਪਣੀ ਕੰਟਰੋਲ ਜੇ ਆਪਣਾ ਆਪਣੀ ਆਸੋਈ ਗੱਦੀ ਹੋ ਗਈ ਪਿਆ ਜੇ ਆਪਣੀ ਬੁੱਧੀ ਹੋ ਜਾਂਦਾ ਚਾਹੁੰਦੀ ਹੈ ਬੰਦੂ ਬਚਾਉ ਕੋ ਇਹ ਬੁੱਤਿਆਂ ਨਾਲ ਚਾਹੁੰਦੀ ਹੈ ਆਪਣੀ ਰਾਜ ਨੂੰ ਜੇ ਸਾਪੜੀ ਹੀ ਆਪਣੇ ਬੱਚੇ ਨੂੰ ਖਾਣਾ ਚਾਹੁੰਦੀ ਹੈ ਬਚਾਉ ਕੋ ਬੜੀ ਮੁਝਾਸ ਜੀ ਅੱਜਿ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ ਹੂੰ ਸਿੱਖੀ ਤੋਂ ਦੂਰ ਲਿਜਾਣ ਦਾ ਸਾਧਨ ਜਿਉਂ ਉਹ ਅਚੋਕ ਕੋਰ ਦਸੋ ਅਸੀਂ ਤਾਂ ਠੀਕ ਬਲਦੇ ਹਾਂ ਕਿ ਜੋ ਹੋ ਰਿਹਾ ਠੀਕ ਹੋ ਜਾਏ ਇਹ ਤੋਂ ਉਹਦੇ ਡਿਊਟੀ ਇਹ ਕਰਦੇ ਹਨ ਆਹ ਬਾਤ ਵੀ ਪਤਾ ਇਸ ਆਦਮੀ ਦੀ ਬਿਲਕੁਲ ਉਹ ਭੋੜਾ ਉਹ ਦਰਦੋਸ ਹੈ ਉਹ ਸਾਰੀਆਂ ਭਗਤੀ ਇੱਥੇ ਹੋ ਜਾਂਦੀ ਹੈ ਜਿਹੜੀ ਇਹ ਪਹਿਲਾਂ ਦੂਜੇ ਕਰਦੇ ਰਹੇ ਇਹਨਾਂ ਨੂੰ ਪਤਾ ਹੁੰਦਾ ਹੋਏ ਵੀ ਜਦ ਹੜਦੇ ਹੂੰ ਉਹ ਸਾਰੇ ਅਪਰਾਧ ਇਹਨਾਂ ਦੇ ਪਕੜਾਤੀ ਆ ਦੇ ਉਹ ਆਣੇ ਜਿਹੜੇ ਕਾਨੂੰਨ ਦੇ ਅਪਰਾਧੀਆਂ ਵਾਲੇ ਜਿਹੜੀ ਭਗਤੀ ਹੋ ਜੇ ਸਾਰੀ ਇਹ ਲਾਗੂ ਹੋ ਜਾਂਦੀ ਆਪਣੇ ਆਪ ਕੋਈ ਜਾਣ ਕਿਉਂਕਿ ਇਹ ਫਰਮਾਤ ਸੱਚ ਖੰਦ ਇੱਕੜ ਕਿ ਸਿਆਦ ਵੀ ਗਲ ਕਹੀ ਕਰੂਰ ਜ਼ਵਾਸ ਤੇ ਇੱਕ ਐਸੇ ਦਾ ਫਰਕ ਪੈਦਾ ਰਗਾਇ ਤਾਂ ਪੈਦਾ ਨਹੀਂ ਸੱਚ ਹੋਈ ਸੱਚੇ ਪੜਦਾ ਉੱਥੇ ਤਾਂ ਕੋਈ ਕਿਸੇ ਨੂੰ ਕੋਈ ਰੈਤ ਨਹੀਂ ਹੋਣੀ ਇਹਨਾਂ ਨੂੰ ਵੀ ਸ਼ਾਇਦ ਪਤਾ ਹੋਵੇ ਰੈਤ ਨਹੀਂ ਹੋਣੀ ਪਰ ਇਹ ਵਿਸ਼ਵਾਸ ਨਹੀਂ ਕਰਦੇ ਬਾਣੀ ਤੇ ਇਹ ਵਿਸ਼ਵਾਸ ਕਰਦੇ ਉਹਨਾਂ ਰਾਜਗਰ ਦੇ ਵਿਸ਼ਵਾਸ ਕਰਦੇ ਨੇ ਤਾ ਵਰਤ ਸੰਸਾਰ ਦੇ ਵਿਸ਼ਵਾਸ ਕਰਦੇ ਨੇ ਸੰਸਾਰ ਛੱਡ ਲਈ ਜਾਂਦੀ ਇਹ ਵਿਚਾਰਤਾ ਰੋਲ ਦੀ ਹੈ ਜਿਹੜੇ ਸੰਸਾਰ ਨੂੰ ਇੱਕ ਸਰਾਪ ਸਮਝਦੇ ਨੇ ਸੰਸਾਰ ਚ ਸੰਦੂ ਜਿਹੜੇ ਸਮਝਦੇ ਨੇ ਸੰਸਾਰ ਉਹਨਾਂ ਬਾਅਦ ਦੇਵਾਨੀ ਦੋਏ ਬਾਤ ਕਰਦੇ ਉਹ ਦਾ ਵੰਡੂ ਨਾ ਫਰਦ ਕਰਨੀ ਹੋਈ ਹੈ ਨਾ ਇੱਥੇ ਜੀ ਲੱਗੇ ਆ ਰਹੇ ਐ ਚ ਬਕੌਰ ਤਾਂ ਪਾਗਲ ਹੈ ਜਿਹੜਾ ਸਰਦਾਰ ਛੱਡੂ ਦੀ ਗੱਲ ਕਰ ਚੁਕੂ ਉਹਨਾਂ ਆਦਮੀ ਸੋਚੂਗਾ ਪਾਗਲ ਹੈ ਮਤਲਬ ਕੀ ਪਾਪ ਜਲਪਾਰ ਪਰ ਇਹਦੀ ਗੱਲ ਕੀ ਰਹੀ ਗਈ ਫਿਰ ਨਾ ਨਾ ਉਹ ਸਿਰਫ ਕਹਿੰਦੇ ਨੇ ਵੀ ਆ ਲੋਕਾਂ ਦੀ ਸੇਵਾ ਸੁਭਾ ਕਰਦੇ ਨੇ ਦੂਜੇ ਧਰਮ ਉਹ ਪ੍ਰੈਕਟੀਕਲੀ ਇਸਾਈ ਜ਼ਿਆਦਾ ਕਰਦੇ ਕੰਮ ਤੇ ਦਾ ਧਰਮ ਵੀ ਤੁਹਾਡਾ क्योंकि ਤੁਸੀਂ ਉਹ ਧਰਮ ਦਾ ਖਿੱਸਾ ਕੱਟ ਕੇ ਨਾ ਜਿਹੜਾ ਜਿਆਦਾ ਵਧੀਆ ਸੀ ਉਹ ਤਾਂ ਪਾਸੇ ਕਰ ਦਿੱਤਾ ਜਿਹਦੇ ਕਰਕੇ ਧਰਮ ਵਿਸ਼ੇਸ਼ ਧਰਮ ਹੈ ਦੂਰਿਓ ਬਣ ਗਿਓ ਤਾਂ ਤੁਸੀਂ ਵੱਟੇ ਕਬਸੇ ਨੇੜਤਾ ਤੇ ਸਿੰਘ ਜਿਖੇ ਲੋ ਥੋੜੇ ਜਾਲੂ ਵਿੱਚ ਹੈ ਨਹੀਂ ਤੁਹਾਡੇ ਪ੍ਰਚਾਰ ਨਹੀਂ ਦੋਏ ਜਗਾਂ ਉੱਤੇ ਭਾਈ ਗ੍ਰੰਥਾ ਵਿੱਚ ਪਿਆ ਪਿਆਰ ਹੈ ਫੇਰ ਇਹ ਲਿਖਿਆ ਲਿਖਿਆ ਕੀ ਕਰੂ ਲਿਖਿਆ ਤਾਂ ਜੈ ਦੀ ਕਾਲਪ ਤਾਂ ਫਾਂਡੀ ਲੱਗੇ ਲਿਖਿਆ ਵਹੀਰੋ ਬੱਦੇ ਦੀ ਇਹ ਇੱਥੇ ਮਰਜ਼ੀ ਦਾ ਪ੍ਰਚਾਰਕ ਦੀ ਜਲਦੀ ਆਦਮੀ ਬੋਲ ਰਿਹਾ ਜੇ ਗੁਰੂ ਸਪਰਥ ਹੋਵੇ ਗਰਦਲ ਦੇ ਫਾਂਡੇ ਬੋਲਣ ਵਾਲੇ ਰੂ ਹਾਂ ਗੁਰੂ ਹੈ ਉਸਮਰਤ ਚੋਰਾ ਨੇ ਨੂੰ ਸੁਮਰਥੇ ਕਹਿਣਾ ਗਰਦਨ ਤੋਂ ਨਹੀਂ ਫੜਦਾ ਗਰਦਨ ਤੋਂ ਫੜ ਨਾਲ ਸੁਮਰਥ ਨਹੀਂ ਕਹਦਾ ਉਹ ਬੰਦੇ ਦੀ ਉਹ ਨਾਲ ਬਗੜਾ ਛੜਿਆ ਗਰਦਨ ਤੋਂ ਫੜਦਾ ਇਹ ਹੱਥ ਬੜਾ ਲੈਣੇ ਜੋ ਬਥੇਰੇ ਬੇਸ ਬੈਣੇ ਕਿ ਕਬੀਰ ਦੀ ਜਿਹੜੀ ਬਾਣੀ ਪੜੀ ਉਹ ਵੀ ਤਾਂ ਇੱਥੇ ਪਈ ਸੀ ਉਰੀ ਸੀ ਪਈ ਕਿਨੇ ਵਾ ਸਮਝ ਪਈ ਐ ਵਿਚਾਰਤਾਰਾ ਸੈਂਕੜੇ ਵਾਲੇ ਪ੍ਰਗਟੋਂ ਸੈਂਕੜੇ ਵਾਲ ਨੂੰ ਰੁਲ ਫੇ ਦਬਤੀ ਊੜੇ ਘੜ ਲੈਣੇ ਦੱਬੀ ਹੋਈ ਐਡੀ ਗੱਦ ਪੈ ਚੁੱਕੀ ਐ ਇੱਥੇ ਢੂੜੇ ਮੇ ਵੀ ਢੂੜੇ ਬੋਲਦੇ ਨੇ ਜਿਹੜੇ ਵੱਡੇ ਵੱਡੇ ਬਾਤ ਕਰਦੇ ਨੇ ਢੂੜੇ ਫਿਰਦੀ ਐ ਢੂੜੇ ਹੋਰ ਪਈ ਜਾਂਦੀ ਐ ਪਖੰਡਵਾਦੀ ਢੂੜੇ ਐ ਹੋਰ ਕੀ ਕਿ ਕਰਦੇ ਤੈ ਕ ਸਮਾਤ ਉੱਚ ਦੇ ਮਗਰ ਬੈ ਜਾਣਗੇ ਮੈਂ ਝਾੜ ਕੇ ਦੱਸਿਆ ਵੀ ਆਹ ਕੀ ਲਿਖਿਆ ਹੋਇਆ ਉਹ ਤਾਂ ਮਗਰ ਬੈ ਕਾਮ ਕੋ ਦੁਸ਼ਟਾਈ ਦੁਸ਼ਟਾਈ ਨਾਲਕ ਜਾ ਕਿਰਪਾ ਗੁਸਾਈ ਤੀਨੂ ਕੋ ਸਾਡੀ ਕਿਰਪਾ ਹੋ ਜਾ ਤਾਂ ਦੁਸ਼ਟਾਈ ਚੜ੍ਹ ਕੁਸ਼ਲੇ ਦੇ ਕਬੂਲੇ। ਹਈ ਤੋਗੋ ਸਾਈ ਲੱਭਣੇ। ਸਾਈ ਬਾਹਰ ਵੀ ਹੋ ਸਕਦਾ ਹੈ। ਸਾਈ ਲੱਭਣੋਂ ਫਰਕ ਹੈ ਕਵਤਾ ਦੇ ਵਿੱਚ। ਸਾਈ ਆਦਮੀ ਵੀ ਕਹਿਣੇ ਲੱਗੇ। ਸਾਈ ਸਾਈ ਨੂੰ ਕਹਿਦੇ ਸਾਰੇ। ਸਾਈ ਦਾ ਫਤਵਾ ਸਾਈ ਉਹਦੇ ਵਿੱਚ ਸਾਈਜ਼ ਦੇ ਵਿੱਚ ਬਹੁਤ ਜਗ੍ਹਾ ਵਰਤਿਆ ਹੋਇਆ ਹੈ ਸਾਈ ਦਾ ਆਤਪਤੀ ਵੀ ਹੁੰਦਾ ਹ ਹ ਸਰਦਾ ਸਾਈ ਸਾਈ ਮੰਡਾ ਇੱਟੜਾ ਹੈ ਸਾਈ ਮੰਡਾ ਇੱਟੜਾ ਮੇਰੇ ਇਸ ਕਰ ਗੋਸਾਈ ਲਾਫ ਵਰਤੇ ਜਾਣ ਕੇ ਜਿਹੜਾ ਆਤਬੋਲਾ ਸਾਈ ਹੈ ਦੇ ਉੱਤੇ ਛਾਹੀ ਦੀ ਰੈਕ ਨਹੀਂ ਚੱਲੇ ਸਾਈ ਕੀ ਸੀ ਸਾਈ ਮੇਰਾ ਛੜਾ ਹਾਂ ਹਮ ਆਉਂ ਹਮ ਆਉਂ ਮਾਮਾ ਮਿਟਲਾ ਹੈ ਬਾਹਲਾ ਦਾ ਮਿਟੜਾ ਹੁੰਦਾ ਜੀ ਬਾਹਲਾ ਰੁੱਕੀ ਦੁੰਦਾ ਜੀਜੀਬ ਕੀਤੇ ਸੀ ਜਿਹੜਾ ਤੇਰਾ ਘਰ ਵਾਲਾ ਉਹਦੇ ਪਿੰਟੇਜੇ ਰੂਡ ਪਰ ਹੋ ਲੱਗ ਗਿਆ ਬੋਰਡ ਪੈ ਗਿਆ ਹਾਂ ਪਠਾੜਾ ਹਾਂ ਉਹ ਰੁਕਾਤਾ ਘਾਰੜੇ ਨੂੰ ਮੇਹੇਰੀ ਘਾਰੜੇ ਦਾ ਡੈਨਡ ਲੈਣ ਦਾ ਰੁਕਾ ਘਰ ਦੀ ਪੈ ਦੇਖੀ ਜਦੋਂ ਜਦ ਬਣ ਜਾਂਦੀ ਹੈ ਬੱਜ ਕੇ ਉਹ ਕੋਲ ਕੋਲ ਨੂੰ ਜੀਵਨ ਲਾਈ ਕਾਲ ਹੋਇਆ ਹੈ ਲੋ ਇਸ ਕਰਕੇ ਬਿਠੜਾ ਨਹੀਂ ਹੁੰਦਾ ਤੂੰ ਕੀ ਸਮਝਦਾ ਹੁਣ ਤੂੰ ਬਿਠੜਾ ਕਿਉਂ ਪਿਆ ਕਿਉਂ ਬਹਾਲਾ ਤਾਂ ਹੀ ਬਿਠੜਾ ਹੁੰਦਾ ਕਰਾਂ ਦਾ ਖਾਰੇ ਵੀੜਾ ਨਾ ਅਸਲੀ ਬਾਣੀ ਤੁਰਕੀ ਬਾਣੀ ਮਿੱਠੀ ਆ ਜਿਹੜੀ ਬਾਣੀ ਬਾਣੀ ਖਾਰੀ ਹੂੰ ਸਟੀਕ ਉਹਦੀ ਸੋਲੂਸ਼ਨ ਦਿੰਦਾ ਮਿੱਠੜੇ আর ਖਾਰੇ ਦਾ ਜਿਹੜੀ ਕਹਾਣੀ ਹੈ ਨਾ ਤਰੀਏ ਚਰਤ ਦੀ ਪੂਰੇ ਮਿੱਠੜੇ ਦਹੀਂ ਬਿਸ਼ਲੇਸ਼ਡ ਵੀ ਸਰੀਰ ਮਿੱਠੜਾ ਨਹੀਂ ਹੁੰਦਾ ਜਿਹੜਾ ਸਾਂ ਮਿੱਠੜਾ ਹੈ ਉਹਦੇ ਤਾਰੀ ਨਹੀਂ ਹੁੰਦਾ ਇਹਦੀ ਗੱਲ ਉਹ ਦੂਗੀ ਸਮਝ ਪਈ ਆ ਉੱਥੇ ਦੂਗੀ ਕੁਝ ਪਈ ਆ ਥੱਲੇੋਂ ਕੱਢ ਕੇ ਲਿਆਂਦੀ ਆਲੋ ਉੱਥੇ ਤੇ ਤਾਰੀ ਗਏ ਤਾਂ ਤਰੀਏ ਤੇ ਤਰੋਂ ਤੇ ਆ ਸਾਈਂ ਤੇ ਆ ਗੱਲ ਪੰਕਤੀ ਆ ਗਈ ਮਿਠੜੇ ਵਾਲੀ ਮੈਂ ਕਹਤਾ ਉਹ ਭਾਈ ਹੋਣੇ ਜੇ ਤੀਆ ਜਬਰਾ ਬੋਲ ਲਿਆ ਗੇ ਤੇ ਸੱਚ ਹੋਰੋ ਸੋ ਜੀਆ ਨੂੰ ਦਿਵਾਰ ਆਪਿਆ ਜੀ ਆਸ ਹੋਰੇ ਬੋਰੇ ਤੇਰਾ ਦੱਸੋ ਕਿੱਥੇ ਕੀ ਅਗਲਾ ਕਹਿੰਦਾ ਕੀ ਮਤਲਬ ਹੈ ਤਰੀਆ ਚਿੰਤਨ ਦਾ ਭਾਈ ਇਦਾਂ ਹੀ ਕਹਿੰਦੇ ਕੀਤਾ ਨਵੇਂ ਜਿਹੜੇ ਹੁਣਾਂ ਨੇ ਬਣਾ ਦਿੱ ਤਰੀਆ ਜਿਤਰ ਇਹ ਨਵੀਂ ਕਿਰਾਇਆ ਅੱਛਾ ਉਹ ਤਰੀਆ ਜੀ ਤਰੇ ਦਿਖਾਦੇ ਉਹ ਨਵੇਂ ਸੋਧ ਕੇ ਦਿਖਾਦੇ ਨੇ ਅੱਜ ਅੱਜ ਚੱਲ ਰਹੇ ਨੇ ਉਹ ਪੁਰਾਣੇ ਤਾਂ ਸਾਰਿਆਂ ਨੂੰ ਪਤਾ ਹੈ ਚਾਰ ਆ ਰਹੇ ਸਲੋਬ ਯਤਨ ਕਰੋ ਤਾਂ ਅਕਲ ਦੇ ਅਸਰ ਦੇ ਵਿੱਚ ਅਕਲ ਦੇ ਚਿੱਤਰ ਹੈ ਹਾਂਜੀ ਉੱਥੇ ਨਹੀਂ ਨਾ ਕਿਹਾ ਉਹ ਜਿਹੜੀ ਹੁਣ ਆ ਤਾ ਜਿਹੜੇ ਅਕਲ ਹੈ ਇਹਦੇ ਵੀ ਕਈ ਕਿਸਮ ਦੀਆਂ ਦੀ ਕਾਰਡ ਹੈ ਅਕਲ ਦੀ ਕਾਰਡ ਵੀ ਕਿੱਦ ਤਰ੍ਹਾਂ ਕਹਿੰਦੇ ਹਾਂ ਦੇ ਉਹ ਦਿਮਾਗ ਨਹੀਂ ਕਾੜ ਅਕਲ ਨਹੀਂ ਕਾੜ ਕੋਈ ਗੱਲ ਸੀਤਾ ਦਾ ਤਰੀਆ ਚੜੇਤਰ ਦਿੱਤਾ ਹੋਇਆ ਦਾ ਕਕਈਆ ਕਕਈਆਲਾ ਹੁੰਦਾ ਰਾਵੜ ਕਕਈ ਇਹ ਜਿਹੜੇ ਤਰਹੇ